ਜਲ ਤੇ ਦਰਪੋਰ ਫਰਥਾ ਕੇ ਹਾਂ ਹਾਂ ਜਲ ਪਾਣੀ ਦਾ ਸਬਾਰ ਭਾਗ ਦਾ ਸਬਾਰ ਤਰੋ ਗੁੜੀ ਪਾਣੀ ਦਾ ਸਬਾਰੋ ਜੋ ਗੁੜੀ ਖੇਤੀ ਹਦੀਆ ਪਾਣੀ ਦਾ ਰਜਾ ਸਭ ਚੀਜ਼ ਪੈਦਾ ਹੁੰਦੀ ਹੈ ਬਰਬਦਾ ਸਬਾਰ ਤੋਂ ਗੁੜੀ ਰਜਾ ਗੁੜੀ ਸਬਾ ਤੋੜ ਤਦੋਂ ਕੋਲ ਇਸ ਵਾਰ ਨਹੀਂ ਠੀਕੇ ਕਿਸੇ ਨੂੰ ਦੇ ਨਹੀਂ ਸਕਦਾ ਸਤੋਗੁਰਿਆਂ ਨੇ ਕੁਝ ਨਹੀਂ ਦਿੱਤਾ ਕਿਸੇ ਨੂੰ ਜੋ ਸਤੋਗੁਰੇ ਲੈ ਦਿੱਤਾ ਹੈ ਤੇ ਨਹੀਂ ਸਕਦਾ ਜੋ ਲੈਵੇ ਸੋ ਦੇਵੇਗਾ ਬਸ ਸਤੋਗੁਰੇ ਦੀ ਲੋਕਾਂ ਆ ਜਦੋਂ ਕੋਈ ਪਰਵਾਹ ਤਾ ਬੋਲੀ ਵਰਬ ਦੇਖ ਰਿਹਾ ਡੈਟੇਡ ਜੁਰੂਰ ਜੇਸ਼ਾ ਖਾੜੀ ਜਿ ਦੇ ਪੈਣ ਪਰ ਦਰਸ਼ਨੇ ਦੇ ਤੱਕਦੇ ਨੇ ਹੋਰ ਕੋਈ ਜੇ ਸਕਦੇ ਹੋ ਦਰਸ਼ਨ ਠੀਕ ਰੋ ਨਾ ਹੋਰ ਤਾਂ ਜਿਹੜੀ ਟੈਂਪਰੇਚਰ ਹੁੰਦੀ ਉਹਨੂੰ ਡਾਊਨ ਕਰ ਦਿੰਦੇ ਨੇ ਲੈ ਲੈ ਆਬੜੀ ਵਰਤ ਵੀ ਬਾੜ ਜਿਹੜੀ ਹੁੰਦੀ ਬਾੜ ਮੋਟੀ ਦਰਸ਼ਨ ਨਾਲ ਜੀਵਨ ਦੀ ਵੜਦਾ ਉਹ ਦਾ ਫਿਰ ਤੇਹੀ ਦੀ ਲੋਰ ਮੋਤੇ ਰਾਲੀ ਉਹਦੀ ਕੁਆਲਿਟੀ ਨਹੀਂ ਹੈ ਹਾਜੀ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਰੇਕ ਭਵਜਲ ਬਤਾ ਤੇ ਭਰਮੇ ਜਨਮ ਖੁਬਲੇ ਰੇ ਕਾਂਜਲ ਵਾਚੋ ਪਾਪ ਜਲਤੇ ਕਾਢੋ ਪਰੂ ਨਾਨਕ ਤੇਰੀ ਬੜਾ ਜੀ ਲੱਗਿਆ ਹਦਾ ਜਨਮ ਵਿੱਚ ਖੁਬਦੇ ਹਾਂ ਪਰ ਜਦ ਸਮਝ ਆਈ ਉਹ ਤੇ ਤੱਕੋ ਖੁਬਦੇ ਤੇ ਨਾ ਸਹਿਰ ਕਰਦੇ ਤੇ ਰੋਜ ਜੱਡਾ ਲੱਗਦਾ ਸੀ ਉੱਥੇ ਪਚਾੜ ਹੋ ਗਿਆ ਜੀ ਇਹ ਤਾਂ ਭਮਸਾ ਗਰ ਜਦ ਭਮਸਾ ਗਰ ਦਾ ਪਤਾ ਲੱਗਿਆ ਫਿਰ ਕਹਿੰਦੇ ਤੋ ਕੱਢੋ ਵਾ ਤੇ ਪ੍ਰਭੂ ਨੂੰ ਕਹਾਂ ਦੇ ਤੋ ਕੱਢ ਲਾ ਪਹਿਲਾਂ ਕਹਿੰਦਾ ਵੀ ਪ੍ਰਭੂ ਬਚਾ ਲੈ ਇੱਥੇ। ਇਹ। ਪਹਿਲਾਂ ਵੱਲ ਰਹਿ ਜਾਉਣਾ ਨਹੀਂ ਸੀ। ਉਹ ਕਹਿੰਦਾ ਛੇਤੀ ਕੱਢ ਇੱਥੋਂ। ਕਾਢੋ ਪ੍ਰਭੂ ਨਾਲ ਕੇਰੀਟੇ। ਨਾਲੇ ਤੇਰੀ। ਉਹ ਟੈਗ ਤੇਰੇ ਤੇ ਆ ਗਈ ਪਹਿਲਾਂ ਪਬਜਾ ਨੂੰ ਟੈਗ ਬਣਾਇਆ ਹੋਇਆ ਸੀ। ਸੰਸਾਰ ਨੂੰ ਹੀ ਟੈਗ ਬਣਾਇਆ ਸੀ ਇੱਥੇ ਜੀ ਲੱਗਿਆ ਹੋਇਆ ਸੀ। ਸੰਸਾਰ ਨੂੰ ਟੈਗ ਸੀ, ਸਰੀਰ ਨੂੰ ਟੈਗ ਬਣਾਇਆ ਸੀ। ਸਰੀਰ ਸੰਸਾਰ ਹੈ। ਖੇਲ ਤੇ ਖੇਲ ਤੇ ਆਇਓ ਅਨੁਕੁਲ ਜੋੜ ਤੋਂ ਪਾਏ ਜਿਹੜੀ ਜੋੜ ਤੋਂ ਪੈਨ ਪੈਣਾ ਫਿਰ ਉਹ ਇੱਕ ਹੈ ਉਹਦੇ ਵਾਸਤੇ ਇੱਕ ਲੱਖ ਲਗਿਆ ਜਾਂ ਇਹ 1 ਲਗਿਆ ਹੈ ਇੱਕ ਜਿਵੇਂ ਇੱਕ ਇੱਕ ਇੱਕ ਇੱਕ ਦੀ ਏਕਤਾ ਹੈ ਉਹ ਇੰਦਾ ਵਿੱਚ ਮਿਲਦੀ ਉਹ ਜਿਹੜੀ ਏਕਤਾ ਉਹ ਸਾਰਿਆਂ ਦਾ ਸਰੀਰ ਹੈ ਉਹ ਇਹ ਛਾਉਦਾ ਹੈ ਸੁਰਤ ਜਿਹੜੀ ਸੀ ਭਾਈ ਕੀ ਸੀ ਸੁਰਤ ਤੇ ਭਾਈ ਸੀ ਟਿਕਦੀ ਸੁਰਤ ਨਹੀਂ ਸੀ ਜਦਾਂ ਜਰ ਸੁਰਤ ਨੂੰ ਕੋਈ ਜੋੜਵਾ ਤੇ ਟਿਕਾਣਾ ਨਹੀਂ ਮਿਲ ਜੂਗਾ ਜਰ ਕਟਿਆ ਨਹੀਂ ਜੋ ਜਿਹੜੀ ਤੱਕ ਇਹ ਜਿਹੜਾ ਜਾਈ ਜਾਂਦਾ ਸਤ ਬਾੜ ਜੁੜਦੀ ਹੈ ਉਚਾੜ ਹੋ ਜਾਂਦੀ ਹੈ ਹੋਰ ਸਤ ਜਾਈ ਜੁੜਦੀ ਹੈ ਹੋਰ ਸੋ ਹੋਰ ਤੋਂ ਹੋਰ ਤੋਂ ਇੱਕਦਮ ਹੈ ਫਿਰ ਵੀ ਬੈਠਣਾ ਹਵਾਲਾੜ ਚ ਲੱਗਦਾ ਇਕੱਲੇ ਨੂੰ ਜੋ ਜਦਾਬਤ ਦੇ ਬੈਠੇ ਹੋਣ ਫੇਰ ਕੋਈ ਰੋਲਾ ਬਣੀ ਤੇ ਜੀ ਵੀ ਲੱਗ ਜਾਂਦਾ ਇਹ ਹਵਾਲਾ ਲੱਗਣੀ ਪਹਿਲਾ ਹਵਾਲਾ ਲੱਗਣੀ ਜੇਲ੍ਹ ਚ ਵੀ ਤਾਂ ਬਾਹਰ ਬਣ ਗਿਆ ਪੋਜੀਸ਼ਨ ਆਦਮੀ ਹੋ ਰਿਹਾ ਚ ਲੋਕਰੀ ਕਰਨ ਘਰਦਿਆਂ ਤੋਂ ਉਹ ਵੀ ਦੂਰ ਹੁੰਦੇ ਜਿਹੜਾ ਵੀ ਦੂਰ ਹੁੰਦਾ ਵਾਕੀ ਲੋਕ ਉੱਥੇ ਵੇਖ ਰਹੇ ਹੁੰਦੇ ਆਨ ਬਾ ਕੀਆ ਫਿਰ ਪਵੰਦੀ ਦਾ ਜਿਹੜਾ ਥੋੜਾ ਜਿਹਾ ਤੇਲ ਪਵੰਦੀ ਦਾ ਬਜ਼ਲ ਉਹ ਥੋੜਾ ਜਿਹਾ ਬਜ਼ਲ ਤੇ ਪਵੰਦੀ ਦਾ ਉਹ ਕੜ ਤੋਂ ਬਾਹਰ ਕਾਢੋ ਪ੍ਰਭੂ ਨਾਨਕ ਤੇ ਰੇਟੇ ਰੇਟੇ ਖੇਲ ਆਇਓ ਅਨਕ ਜੋਨ ਪਾਏ ਆਹੋ ਖੇਦ ਸਾਧੂ ਮੇਲ ਤੇ ਬਚਨ ਸਮਾਏ ਘਰ ਘੇਰ ਦਵਾਇਓ ਅਨਕ ਜਾਲੂ ਨੂੰ ਦੁੱਖ ਜੋਨ ਅਨਕ ਜੋਰ ਦੁੱਖ ਦੁੱਖ ਪਾਇ ਜਿਹੜੇ ਕਾ ਜੂਦੀ ਉਹਦੇ ਵਿੱਚ ਉਹਦੇ ਕਾ ਜੂਦੀ ਜਿਹੜੇ ਲੀਆਂ ਉਹਦੇ ਦੁੱਖ ਹੀ ਖੇਤ ਬਿਟੇ ਸੁਖ ਨਹੀਂ ਪਾਇਆ ਹੈ ਸੁਖਰੀ ਪਾਇਆ ਤੇ ਸੋ ਕਿਸੇ ਜੂਦੀ ਜਮਨੀਪਾ रुवासी सुख समझ लेसी असल सुख केसी हो बहुत है दुख जदों नहीं सीधा मिलदे या दुख तो राहत मिलदे रुवासी सुख समझ लेले वाह जिद्दा कि रसोई कोई चबोदारी सी रात कांटा रुवासी सुख समझ लेले या कष्टा दो घंटे सोई रीसी तो चुभदी ओ राहत जेडी मिलदी ते बगाले सो ਜਿਵੇਂ ਕੋਈ ਵੱਖਰੀ ਗੱਲ ਜਾਸ ਲੱਗਦਾ ਕਥਾ ਕੀ ਸੁਣਨ ਲੱਗਦਾ ਜੀ ਤੋ ਰਿਹਾਨੀ ਝੋਖੜੀ ਰਾਹ ਜੀ ਮਹਿਸੂਸ ਕਰਦਾ ਪਹਿਲਾਂ ਪਹਿਲਾਂ ਝੋਖੜਾ ਹੋਰ ਝੋਖੜਾ ਬੈਗੁਰ ਬੈਲ ਵਾਲੇ ਵੀ ਮਹਿਸੂਸ ਆ ਜਾਂਦਾ ਆ ਜਿਹੜੇ ਸਿਬਲ ਨਾਲੇ ਲੋ ਵੀ ਕਹਿੰਦੇ ਤੋ ਰਾਹਤ ਬਣੀ ਅਸਲ ਦੇ ਵਿੱਚ ਉਹ ਜਿਹੜੀ ਪਹਿਲੀ ਉਹਨਾਂ ਦੀ ਹਾਲਤ ਹੁੰਦੀ ਬਹੁਤ ਹੀ ਫੈਰਿਟ ਉਹਦੇ ਜਿਹੜੀ ਥੋੜੀ ਬਹੁਤ ਤਬਦੀਲੀ ਆਉਂਦੀ ਹੈ ਚੰਗਾਈ ਵੱਲ ਪਾਸੇ ਨੂੰ ਕਦੇ ਕਬ ਬਗਾਰਾ ਤੋਂ ਪਿਛੇ ਹਟਣ ਤੋਂ ਕਹਿਦੀ ਹੈ ਪਿਛੇ ਹਟ ਜਾਂਦੀ ਉਹ ਪੱਠੀ ਤੋਂ ਹੀ ਬਾਹਰ ਨਿਕਲਦੇ ਬਗਾਰਾਂ ਦੀ ਥੋੜੇ ਜਿਹੇ ਵਾਤ ਜਿਹੜੀ ਰਿਲੀਫ ਹੈ ਉਹਦੇ ਤੋਂ ਪ੍ਰਭਾਵ ਸੀ ਕਿਉਂਕਿ ਵੀ ਅਹੀਂ ਦਵਾਰਾ ਪੁਰਾਣੀ ਉਹ ਹਾਲਤ ਹੋ ਵੀ ਨਾ ਜਿਹੜੀ ਪਹਿਲਾਂ ਸੀ 릴ਿਫ ਜਿਹੜੀ ਮਿਲੀ ਹੈ ਰਿਲੀਫ ਹੀ ਰਹੇ ਵਾਕਿਆ ਹੀ ਰਿਲੀਫ ਹੀ ਰਹੇ ਚਲੋ ਜੀ ਆਪਾਂ ਇਹ ਕਹਿੰਦੇ ਰਿਲੀਫ ਰਹੇ ਜੇ ਸੁਖ ਮਿਲ ਗਿਆ ਸੁਖ ਬੜਿਆ ਹੀ ਰਹੇ ਚਾਹੇ ਥੋੜਾ ਵੀ ਹੋਰ ਕੋਈ ਕਹਿੰਦਾ ਅਨਹਦ ਸੁੱਖ ਖਾਂਦੇ ਉਹ ਰਿਸ਼ਾਦੀ ਹੈ ਸੁੱਖੇ ਬਣਿਆ ਰਹੇ ਇਹ ਰਿਸ਼ਾਦੀ ਹੈ ਉਹ ਸਤਾ ਬਦਲ। ਬਰਦੋ ਸੌਖਾ ਬਣਿਆ ਰਹਿੰਦਾ ਨਹੀਂ। ਟੈਂਪਰੀਰੀ ਤੌਰ ਤੇ ਕੁਝ ਢੇਰ ਵਾਸਤੇ ਲੀਵ ਕੁਲਦੀ ਹੈ। ਜਿਵੇਂ ਕਲਾਸ ਵਿੱਚ ਬੱਚੇ ਪੜ੍ਹਦੇ ਨੇ ਬੜਾ ਬਜਰੂਖ ਦਾ ਟੀਚਰ ਦਾ। ਧਿਆਨ ਰੱਖਣਾ ਪੈਂਦਾ। ਜਿੰਨਾ ਜਰ ਕਲਾਸ ਦਾ ਟੀਚਰ ਬਦਲਦਾ, ਉਹਨਾਂ ਜਰ ਵਾਸਤੇ ਰਲੀਵ ਮਹਿਸੂਸ ਕਰਦੇ ਨੇ ਬੱਚੇ। ਜਦ ਦੂਆ ਟੀਚਰ ਆਇਆ ਤਾਂ ਸੋਈ ਫਿਰ ਉਧਿਆ ਜਾਂਦੀ। ਐਨਾ ਹੈ ਫਰਕ ਪੈਂਦਾ ਹੈ। ਇਹਦਾ ਬੋਝ ਆ ਟੀਚਰ ਦਾ ਸਿਰ ਤੇ ਉੱਤੇ ਉਹਨਾਂ ਦੇ ਗਿਆਨ ਦੀ ਗੱਲ ਆਈ ਹੁਣ ਜਿੰਨਾ ਜਣ ਕੋ ਕਲਾਸ ਚ ਬੈਠੇ ਨੇ ਗੁਰਬਾਨੀ ਟੁੱਟ ਜਾਂਦੇ ਅਸਲੀ ਹੋਈ ਉਹ ਕੰਟੀਨਿਊ ਵਿਚਾਰਦੇ ਰਿਹਾ ਇਹਨੂੰ ਤੁਸੀਂ ਰੀਲੀਫ ਲੈ ਸਕਦੇ ਇਹ ਉਹ ਤਾਂ ਵੀ ਉੱਥੇ ਵੀ ਕੋਈ ਵੀ ਪ੍ਰਕਿਰਿਆ ਜੇ ਉੱਥੇ ਲੱਗਿਆ ਰਹੇ ਕਿ ਕਿ ਆੜੂ ਇਹ ਇੱਕ ਜਿਹੜੀ ਉੱਥੇ ਉੱਥੇ ਇੱਕ ਨੌਵੇਂ ਬਾਦਸ਼ਾਹ ਨੇ ਕਿਹਾ ਵੀ ਜੇ ਸਤ ਕੋ ਚਾਹੇ ਸਦਾ ਤਾਂ ਸ਼ਰਨ ਕੀ ਲੈ ਹਾਂ ਦੀ ਜਨਨ ਦੀ ਗੱਲ ਹੈ ਦੀ ਜਨਨ ਨੂੰ ਰਾਮ ਕੀ ਨੂੰ ਰਾਜਾ ਰਾਜ ਬੋਰਾ ਬਰੁਗਿਆ ਬਰੁਗਿਆ ਅੰਤਿਛੜ ਲੈ ਜਿਹੜਾ ਉੱਚਾ ਤੇ ਉੱਚਾ ਉਹ ਵੀ ਇੱਕ ਸਭ ਤੋਂ ਸਭੇ ਦਾ ਆਰਾਮ ਬੋਲੇ ਕੋਈ ਵੀ ਗਿਆਨ ਕੋਈ ਵੀ ਗਿਆਨ ਸੀਬਤ ਹੋ ਜਾਂਦਾ ਤੇ ਫਿਰ ਅੰਤ ਤੇ ਜਾ ਸੁਖਸਾਰੀ ਜੀਵਤ ਸੀਬਤ ਸੀਬਤ ਜਿੱਤੇ ਉਦੀ ਸੀਬਾ ਆ ਗਿਆ ਤੇ ਇਹ ਫੇਵ ਉੱਤਰੇ ਤੇ ਤੁਸੀਂ ਜਾਲੇ ਨੂੰ ਉਢੇਡੋਗੇ ਰੱਸੀ ਉੱਧਰ ਦੀ ਹੋ ਚਲੀ ਜਾਵੇ ਇਹਦੀ ਵਿਚਾਰ ਨਾ ਰੱਸੀ ਉਢੇਡਣ ਦੀ ਗੱਲ ਹੈ ਸੜ ਜਾਣਾ ਰੱਸੀ ਨੂੰ ਸੁਲਝਾ ਰਹੇ ਹੋ ਜਿੱਦੀ ਸੁਲਝਦੀ ਰਹੂਗੀ ਕਿਤਾਕਾਰ ਨੂੰ ਤੇ ਕਹਿ ਹੋ ਵੀ ਮੈਂ ਲਈ ਕੁਝ ਕਹਿ ਚਾਰ ਗੱਲਾਂ ਐ ਇੱਥੇ ਸੁਲਝਾਈਏ ਚਲੋ ਕੋ ਸੁਲਝਾਏ ਇੱਕ ਕਾਹ ਇੱਕ ਉਹ ਹੈ ਸੁਲਝ ਰਜਾਇਏ ਉਤੇ ਰਸ ਵੀ ਆਇਆ ਦਬੀ ਕੋਈ ਗੱਲ ਬਣੀਏ ਨਾ ਮਾਰਾਸ ਵੀ ਆਏ ਉਹਦੇ ਜਿਹੜਾ ਪਹਿਲਾਂ ਗਿਆ ਉਹ ਚ ਵੱਧਾ ਵੀ ਹੋਵੇ ਪ੍ਰਾਪਤੀ ਵੀ ਹੋਈ ਹੈ ਸਬ지 ਵੀ ਹੋ ਗਈ ਕੁਝ ਮਿਲਿਆ ਵੀ ਹੈ ਉਹ ਤਾਂ ਮਿਲਣ ਨੂੰ ਕੁਝ ਨਹੀਂ ਤੁਹਾਨੂੰ ਵੀ ਦੋਇ ਇੱਕੀ ਕੁਝ ਨਹੀਂ ਕਰ ਲੋ ਰਾਮ ਰਾਮ ਕਰਦੇ ਕਿ ਬੱਲੂ ਵੈਰ ਵੈਰ ਕਰਦੇ ਕਿ ਬੱਲੂ ਓ ਐ ਹੋ ਗਿਆ ਮੈਨੂੰ 100 ਘੰਟਾ ਹੋ ਗਿਆ ਮੈਨੂੰ ਉਹ ਤਾਂ ਫਿਰ ਬਿਲਡ ਕਰਦੇ ਰੂ 400 ਤੱਕ ਗੱਲਿਆ 100 ਘੰਟਾ ਤੇ ਇਹਦਾ ਕੀ ਮਿਲਦਾ ਕੋਈ ਨਹੀਂ ਪਤਾ ਕਿ ਮਿਲਣਾ ਉਹ ਕਹਿੰਦਾ ਕਦੋਂ ਮਿਲਣਾ ਇਹਦਾ ਇਕੱਠਾ ਹੀ ਬਲੂਗਾ ਉਹ ਤਾਂ ਕਹਿੰਦੇ ਮਿਲੂਗਾ ਇਹਦਾ ਇਕੱਠਾ ਹੀ ਬਲੂਗਾ ਜਿਵੇਂ ਕਬੀਰ ਫੇਰੀ ਇੱਕ ਦਿਨ ਇਕੱਠਾ ਹੀ ਮਿਲ ਜਾਣਾ ਇਹ ਤਾਂ ਮ ਬਾਲੀ ਕਹਿੰਦਾ ਦੀਵਾ ਬਲਿਆ ਦੇ ਰਾਜੇ ਜਿੱਡੇ ਬੱਤੀ ਹੋਊ ਜਿੱਦਾਂ ਤੇਲ ਹੋ ਜਿਹੇ ਜਿਹੇ ਦੀਵਾ ਹੋ ਪਰਦੇ ਜੇ ਜੜੂ ਗਾਉਣਾ ਦੇ ਜਿਹੜਾ ਕਹਿੰਦੀ ਗੁਰ ਸਾਗਰ ਤੋੜ ਉਹ ਏਕੇ ਨੂੰ ਕਿਹਾ ਗੁਰ ਸਾਗਰ ਰਤਨੀ ਨਹੀਂ ਤੋ ਗੁਰਤਾ ਗਿਆਨ ਨੂੰ ਹੈ ਇਹ ਕਿਹਦਾ ਗਿਆਨ ਉਹ ਗਿਆਨ ਸਾਗਰ ਹੈ ਇਹ ਕੇਲੇ ਜੋ ਜਿੱਥੇ ਏਕੇ ਦੀ ਸੈਂਸ ਜਿਹੜਾ ਉਸ ਸੈਂਸ ਚਾ ਉਹ ਨਾ ਇਹ ਕਾਦਾ ਸ਼ਬਦ ਹੈ ਉਹਦੇ ਚ ਨਹੀਂ ਰਤਨ ਦੀ ਜੋੜ ਲਈ ਲੈ ਲਈ ਗਿਆਨ ਦਾ ਭਿਆਨ ਜਦ ਗਿਆਨ ਨੂੰ ਭਿਆਨ ਕਰਦੇ ਉਸ ਉਹ ਸ਼ਬਦ ਜੇ ਭਿਆਨ ਨਹੀਂ ਕਰਦੇ ਤੂੰ ਅਨੁਭਵ ਨਹੀਂ ਇਹ ਐ ਕਿ ਮਾਇਆ ਦਾ ਗੁਣ ਤਾਂ ਹੈਗਾ ਨਹੀਂ ਉਹ ਸਾਗਰ ਭਰੇ ਜਿਹਦੇ ਵਰਜੀ ਬੋਤੀ ਚੱਕ ਲਿਆ ਹੋਇਆ ਇਹ ਨਹੀਂ ਕਿ ਤੇਰਾ ਸੰਦੇਸ਼ ਉਹੀ ਕਿਹੜਾ ਇਹ ਕਿਹੜਾ ਸ਼ਬਦ ਜਿਹੜਾ ਤੁਸੀਂ ਦੱਸਿਆ ਤੇ ਇੱਕ ਹੈ ਨਹੀਂ ਇੱਕ ਕਹਿ ਸਕਦੇ ਸਾਰੇ ਦੀ ਜਿਹੜੀ ਆਵਾਜ਼ ਹੈ ਉਹਨਾਂ ਇੱਕ ਰਹੀ ਹੈ ਫਿਰ ਇੱਕ ਹੈ ਕੋਈ ਫਰਕ ਰੱਖੇ ਕੋਈ ਸ਼ਕਤੀ ਜ਼ਿਆਦਾ ਹੈ ਕੱਲੇ ਦੀ ਜੇ ਉਹੀ ਆਵਾਜ਼ ਉਹ ਚੋਦੀ ਸ਼ਕਤੀ ਨਹੀਂ ਜਿਸ ਨੇ ਸਾਰਿਆਂ ਦੀ ਕਰਾਇਆ ਜੇ ਨਾਨਕ ਬੋਲਦਾ ਹੈ ਉਹੀ ਗੱਲ ਆਹ ਨਾਨਕ ਕੀ ਬੋਲਦਾ ਹੋਇ ਬੰਦਾ ਕੇਵਲ ਆਦਮੀ ਬਾਸ ਤੇ ਰਹ ਜਿਹੜਾ ਜਾਨਵਰ ਬੋਲੂਗਾ ਜਿਹੜਾ ਆਦਮੀ ਬੋਲੂਗਾ ਉਹ ਆਪਣੀ ਉਹ ਗੱਲ ਕਰੂ ਉਸੇ ਉਸੇ ਜਾਨਵਰਾਂ ਵਾਸਤੇ ਜਿਹੜਾ ਜਿਹੜੀ ਜੁਦੋ ਜਾਂਦਾ ਦੂਜੀਆਂ ਜੁਦੋਆਂ ਵਾਸਤੇ ਟਿਕਲ ਕਰ ਸਕਦਾ ਇਹ ਨਾ ਕਰ ਸਕਦਾ ਨਹੀਂ ਕਰ ਸਕਦਾ ਤੇ ਉਹ ਸਾਰਿਆਂ ਦਾ ਉਹਦੇ ਵਿੱਚ ਸਾਰਿਆਂ ਦਾ ਗਿਆਨ ਇਸ ਸ਼ਬਦ ਵਿੱਚ ਤੈਨੂੰ ਤਾਂ ਸਾਰਾ ਦਾ ਗਿਆਨ ਹੈ ਬਾਈ ਇਹ ਜਿਹੜਾ ਸ਼ਬਦ है ਕਹਿੰਦੇ ਹ ਇਹਨੂੰ ਤਾਂ ਗੁਰ ਕਰਕੇ ਹੈ ਗੁਰੂਰੀ ਇਹ ਗੁਰ ਸ਼ਬਦ ਹੈ ਗੁਰੂ ਸ਼ਬਦ ਉਹ ਗੁਰੂ ਸ਼ਬਦ ਹੈ ਉਹ ਗੁਰੂ ਸ਼ਬਦ ਹੈ ਇਹਦੇ ਚ ਵੀ ਰਹੇ ਇਹੀ ਗੁਰੂ ਨੂੰ ਸਾਧਨ ਗਿਆ ਸੰਜੇ ਜੀ ਹਾਂ ਇਹ ਇਹ ਜਿਹੜਾ ਹੈ ਗਿਆ ਜਿਹੜੇ ਜਿਹੜੇ ਰਤਨ ਨਿਹਰਤਨ ਦਾ ਨਾਮ ਹੈ ਜਿਹੜੀ ਜਾਣਕਾਰੀਆਂ ਨੇ ਜਾਣਕਾਰੀਆਂ ਨੇ ਜਾਣਕਾਰੀਆਂ ਉਹਨਾਂ ਨੂੰ ਰਤਨ ਜਿਹੜੀਆਂ ਨੇ ਖੋਲਦਾ ਸਾਰੇ ਗੋੜ ਰਲ ਕੇ ਸਾਰੇ ਗੋੜ ਇਨੇ ਗੋਲਗਾ ਨਾਲੇ ਪਰਪਰਨਾ ਸੁਤੇ ਤੇ ਤੋ ਘੱਟ ਗੋਲਗਾ ਨਾਲੇ ਪਰਪਰਨਾ ਸੁਤੇ ਤੇਰੇ ਲੋਗ ਦਾ ਗਿਆਨ ਹੈ ਵਾਹ ਦੇਖੋ ਉੱਥੇ ਆਪਾਂ ਕਹਿੰਦੇ ਜੋਤ ਕੋਈ ਆ ਗਿਆ ਹਾਂ ਗੁਰ ਸਾਹਿਬ ਇਹ ਤਾਂ ਐਸੇ ਦੀ ਗੱਲ ਜੋਤ ਹੈ ਜੋਤੀ ਜੋਤ ਰਲੀ ਉਹ ਤਾਂ ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ ਉਥੇ ਵੀ ਜੋਤੀ ਜੋਤ ਮਨ ਜਿਤਨੂ ਕਹਿਆ ਤੇ ਉਥੇ ਵੀ ਜੋਤੀ ਆ ਹੋਈ ਹੈ ਜੋਤੀ ਦੋ ਜੋਤਾਂ ਨਹੀਂ ਲੱਗ ਰਹੀਆਂ ਸੂਰਜ ਕਰਨ ਲਈ ਕੇਰਨ ਜਿਹੜੀ ਜੋਤੀ ਹੈ ਟੁੱਟ ਜੋ ਅੱਗੇ ਵੀ ਤਾਂ ਗਿਆਤਾ ਸਭੂਰੂ ਦੀ ਆਹਾਂ ਸਭੂਰੂ ਦੀ ਆਹਾਂ ਜਿਹੜੀ ਸਾਡੀ ਸੁਰਤ ਹੈ ਉਹ ਹੈ ਜੋਤ ਵਿੱਚੋਂ ਦੇਖੋ ਜੋਤ ਕੀ ਹੈ ਜਿਹੜੀ ਜਗ ਰਹੀ ਹੈ ਜਿਹੜੀ ਲਾਈਟ ਦੇ ਰਹੀ ਹੈ ਜੋ ਤੋਸੇ ਤੁਹਾਨੂੰ ਕਹਿੰਦੇ ਜਿਹੜੀ ਦੀਵਾ ਜਾਲਿਆ ਉਹਨੂੰ ਜੋਤ ਪ੍ਰਾਪਤ ਹੋ ਰਹੀ ਐ ਸਾਨੂੰ ਉਹ ਜੋਤ ਐ ਜੋ ਪ੍ਰਾਪਤ ਹੋ ਰਹੀ ਐ ਜੋਤ ਐ ਜਿਹੜੀ ਜਿੱਥੋਂ ਪ੍ਰਾਪਤ ਹੁੰਦੀ ਉਹ ਜੋਤ ਐ ਉਹ ਜੋਤ ਐ ਪ੍ਰਾਪਤ ਜੋਤੀ ਹੋ ਰਹੀ ਐ ਜੋਤ ਤੋਂ ਜੋਤੀ ਪੈਦਾ ਹੋ ਰਹੀ ਐ ਸੁਰਤ ਜਿੱਥੋਂ ਪੈਦਾ ਹੋ ਰਹੀ ਐ ਉਹ ਜੋਤ ਐ ਉਹ تین ਗੀ ਜਿਵੇਂ ਜਵਾਸ ਕੈ ਬਖੇ ਸਮਸਤ ਇੱਕ ਉਹ ਜੋਤ ਹੈ ਉਹ ਜੋਤ ਇਹ ਤਾਂ ਜੋਤ ਕੀ ਜਾਤੀ ਜਾਤੀ ਜੋ ਦਾ ਹੈ ਜੇ ਵੀ ਸ਼ਬਦਾਂਗਾ ਆ ਜਾਤੀ ਇੱਕ ਸਰੀਰ ਵਿੱਚ ਜਿਹੜੀ ਜੋਤ ਜੋਤ ਕੀ ਜਾਤੀ ਜੋਤ ਦੇ ਵਿੱਚੋਂ ਜੋ ਨਿਕਲੀ ਆ ਜਾਤੀ ਸੁਰਤ ਤੇ ਜੋਤ ਕੀ ਜਾਤੀ ਉਹ ਜੋਤ ਕੀ ਜਾਤੀ ਜੋ ਤੁ ਲਾਗੇ ਕਚੂਆ ਫਲ ਮੁਕਤੀ ਜੇ ਤੁ ਲਾਗੇ ਕਚੂਆ ਫਲ ਮੁਕਤੀ ਪਰ ਕਚੂਆ ਫਲੇ ਆਦਮੀ ਦੇ ਅੰਦਰ ਨਿਕਲਦੀ ਹੈ ਸੁਰਤ ਗਿਆਨ ਅੰਦਰ ਦੇਖਦੀ ਹੈ ਜੇ ਗਿਆਨ ਕਰੂ ਕਚਾਈ ਕਰੂ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਨੂੰ ਖਾਣੀ ਕੋਤਾ ਸਰੀਰ ਕੱਚੇ ਦੇ ਵਿੱਚ ਦੀ ਦੇਖ ਰਹੀ ਆੱਖਾਂ ਮਾਇਆ ਦੇ ਵਿੱਚ ਦੇਖ ਕੇ ਮਾਇਆ ਦੇ ਵਿਖਾਨ ਕਰੂਗਾ ਮਾਇਆ ਤੋਂ ਪਰੇ ਦਾ ਵਿਖਾਨ ਨਹੀਂ ਕਰਦਾ ਜੇ ਮਾਇਆ ਤੋਂ ਪਰੇ ਦਾ ਵਿਖਾਨ ਕਰਨਾ ਤਾਂ ਮੇਰਾ ਅਖੰਧ ਤੇ ਘਣਾ ਬੂ ਬਰ ਕਰੋ ਤੇ ਸੋਡੋ ਜੇ ਮਾਇਆ ਤੋਂ ਪਰੇ ਦਾ ਵਿਖਾਨ ਕਰਨਾ ਨਾ ਫਿਰ ਕੰਨ ਆ ਨੂੰ ਛੱਡ ਕੇ ਵਿਖਾਨ ਕਰਨਾ ਪਊਗਾ ਤੇ ਨੂੰ ਛੱਡ ਕੇ ਵਿਖਾਨ ਕਰਨਾ ਪਊਗਾ ਇਹਦੇ ਵਿੱਚ ਖਜਵਾ ਹੀ ਹੋਊਗਾ ते शरीर तो परे दी गल करदी है शरीर तेरा बिलो जुड़े ते तेरी कुटी ते तांग गल हो सके और गलियो अब फल कहदा पर कछुवा फल लगै रहा जो फल लगै है ज्ञान है फल ज्ञान नु क्या है ज्ञान फल ज्ञान ने यो ज्ञान करू ਜੇ ਸ਼ਰੀਰ ਨਾਲ ਜੁੜ ਕੇ ਕਰੋਗੀ ਕਜੂਆ ਫੜੋ। ਸ਼ਰੀਰ ਨਾਲ ਗੱਲ ਕਰੂਗੀ ਜੋ ਅੱਖਾਂ ਨਾਲ ਪਿੱਛੇ ਵੀਰ ਚੁੱਕਿਆ ਲਿਖਿਆ ਹੋਇਆ ਉਹਨੂੰ ਪੜ੍ਹ ਕੇ ਬਿਆਨ ਕਰੂਗੀ ਕਿ ਕਜੂਆ ਸਾਰਾ। ਇਸਤੀ ਸਾਰਾ ਕਜੂਆ ਫੜਿਆ। ਬਾਪਰੇ ਹਰ ਕਿਸੇ ਨੇ ਤਾਂ ਅੱਖਾਂ ਨਾਲ ਦੇਖਿਆ ਹੀ ਜੋ ਖਾਨੋਂ ਦੇਖਿਆ ਸਭ ਝੂਠ ਹੈ। ਦਾਸ ਹੁੰਦਾ ਸਭ ਇਹਨੂੰ ਉਪਰਚਾਰ ਕਰਨਾ ਬੰਦ ਕਰਨਾ ਸਰਪਾ ਦੇ ਜਿਹਾ ਹੈ ਹੈ ਜੋ ਪ੍ਰਚਾਰ ਕਰਦੇ ਨੇ ਆ ਜੂਗਾ ਬੜਾ ਉਹ ਕਹਿੰਗੋ ਦੇ ਲੋਕ ਜੋਤੇ ਨੇ ਹੈ ਕਿ ਉਹ ਲੋਕਾਂ ਦਾ ਸਮਝ ਨਹੀਂ ਲੋਕ ਨਹੀਂ ਵੱਡਦੇ ਲੋਕ ਲੋਕ ਰਹੇ ਜਾਂਦੇ ਲੋਕ ਵਾਸਤੇ ਲੋਕ ਵਾਸਤੇ ਇਹ ਲੋਕ ਵਾਸਤੇ ਲੋਕ ਦੀ ਗੱਲ ਹੈ ਨਾ ਲੋਕ ਦੀ ਗੱਲ ਲੋਕ ਤੇ ਲੋਕ ਚ ਉਹ ਅਲੋਕ ਹੈ ਅਲੋਕ ਦੀ ਗੱਲ ਹੈ ਇਹ ਲੋਕ ਦੀ ਗੱਲ ਹੈ ਲੋਕ ਇਸ ਲੋਕ ਦੇ ਰਹਿਣ ਵਾਲੇ ਨੇ ਲੋਕ ਕਹਿੰਦੇ ਨੇ ਜਿਹੜੇ ਇਸ ਲੋਕ ਦੇ ਵਿਚੇ ਕੋਈ ਪ੍ਰੋਬਲਮ ਹੈ ਨਾ ਨਹੀਂ ਵੱਲੋਂ ਉਹ ਕਹਦੇ ਵੀ ਮਨ ਪ੍ਰੋਬਲਮ ਹੈ ਅਸੀਂ ਮਤਲਬ ਉਹ ਕੀਪ ਆਪਰ 5000 ਸਾਲ ਲੋਕ ਰਹਾ ਲੇ ਦੌੜੀ ਹੋ ਸਰ ਨੇ ਉਹ ਇੱਕ ਦਲੀਲ ਦਿੱਤੀ ਉਹ ਕਹਿੰਦਾ ਦੁੱਧ ਆ ਜਾਂਦਾ ਦਹੀਂ ਹੈ ਇਹਦਾ ਹਮ ਦੁੱਧ ਕਹਿੰਦੇ ਨਹੀਂ ਪਤਾ ਜੇ ਮੱਖਣ ਬਣਾਉਣਾ ਹੈ ਅਨੇ ਦੇਂ ਕਿ ਤੁਸੀਂ ਮੱਖਣ ਨਹੀਂ ਬਣਾ ਸਕਦੇ ਜਿੰਨਾ ਜਿੰਨਾ ਪਾਣੀ ਨਹੀਂ ਪਾਉਂਦੇ ਪਰ ਪਾਣੀ ਉਹ ਸਾਰੀ ਜਿਹੜੇ ਐ ਐਗਜ਼ੈਂਪਲਾਂ ਉਹਨਾਂ ਨੂੰ ਬਣ ਨਹੀਂ ਗਿਆਦੇ ਉਹ ਉਹ ਸਭ ਅਧਿਆਤੋਂ ਪਾਣੀ ਗਈ ਜਾਂਦੇ ਨੇ ਜੀ ਸਾਡਾ ਬਣਦੀ ਆਂਦੀ ਬਣਾਉਂਦੇ ਪਤਾ ਬਲੋੜਾ ਨਹੀਂ ਬਣਾਉਂਦੇ ਕਹਿੰਦੇ ਮੱਖਣ ਨਹੀਂ ਨਹੀ ਨਹੀ ਕੱਦ ਖਾਇ ਕੀ ਬੰਦਾ ਕਹਿੰਦਾ ਕਿ ਪਾਣੀ ਨਹੀਂ ਹੈ ਲੱਸੀ ਪਾਈ ਹੈ ਖਟਾ ਲਾ ਬਹਾਰੋਂ ਮੱਖਣ ਦਾ ਪਾਣੀ ਖਟਾ ਲਾਇਆ ਉਹ ਸਿਰਫ ਖਟਾ ਲਾਇਆ ਦੁੱਧ ਨੂੰ ਖਟਾ ਹੀ ਲਾਇਆ ਤਾਂ ਸੰਦ ਬਣ ਗਿਆ ਇਹ ਹੀ ਲੱਸੀ ਬਣ ਜੇ ਖਟਾ ਹਣਾ ਖਟਾ ਇਹ ਨਸਰ ਪਾਈ। ਅਜਿਹੇ ਜਿਹੇ ਐਗਜ਼ੈਂਪਲ ਨਸੀ ਹੋਈ ਆ ਬਾਈ ਕਿਥੋਂ ਆ। ਜਿਹੜਾ ਜਿਹਦਾ ਸਹਲ ਬਸਾਤ। ਨਾਸਪਤ ਦੇ ਵਿੱਚ ਸੰਸਾਰੀ ਸੱਚ ਜਿਹੜਾ ਹੈਗਾ। ਸੰਸਾਰੀ ਸੱਚ ਖਟਾ ਲਾਇਆ। ਅਸਰੇ ਪਾਣੀ ਉਹ ਪੈ ਗਿਆ। ਪਾਣੀ ਨਹੀਂ ਹੈ। ਖਟਾ ਅਜੇ ਦਾ ਮੱਖਣ ਨਿਕਲਿਆ ਉਹਦਾ ਪਾਣੀ ਤੋਂ ਬਣਾਇਆ ਇਹ ਬਾਹਰ ਵੀ ਕੱਲੇ ਦੇ ਨੂੰ ਨਿਕਲਣ ਲੜਕੀ ਜੋ ਮੱਖਣ ਨਿਕਲਿਆ ਉਹਦਾ ਪਾਣੀ ਜੱਟਾ ਲੱਗਿਆ ਪਾਣੀ पर फिर भी सच है चीजो वो सच है सच है आज भी है सच है पर वो तत् नहीं है ये सच है भी ये जगत है ये सच्चा गल आई ज्योत गुप्त ਠੀਕ ਹੈ ਇਹ ਜਿੱ ਅੱਗੇ ਇਖਤਤਾ ਬਾਯਾ ਦਾ ਇਹ ਵੀ ਬਾਯਾ ਵਿੱਚ ਮਾਇਦੇ ਤਾਂ ਦੀ ਗੱਲ ਕੀਤੀ ਹੈ ਪਰਮ ਦਾ ਦੀ ਗੱਲ ਗੁੱਪਤ ਹੈ ਅਜੇ ਦੀ ਤਾਂ ਗੱਲ ਕਹਿ ਹੈ ਪੁੱਛਾ ਛੇ ਉਹ ਪਰਮ ਦਾ ਇਤਿਹਾਸ ਹੈ ਉਹ ਪਰਮ ਦਾ ਇਤਿਹਾਸ ਹੈ ਉਹਦੀ ਲੋੜ ਨਹੀਂ ਹੈ ਉਹਦੀ ਲੋੜ ਕਰਕੇ ਉਹਦੀ ਇੱਕ ਭਾਸ਼ਾ ਹੈ ਉਹਦੇ ਤੁਸੀਂ ਭਾਈ ਕਹੋਗੇ ਕਿਹਦਾ ਭਾਈ ਸੀ ਕਿਹਦਾ ਪੁੱਤ ਸੀ ਕਿੱਥੇ ਜੰਮਿਆ ਸੀ ਉਹ ਸਾਰਾ ਇਹਦੇ ਨਾਲ ਨਹੀਂ ਲਿਖਣੀ ਭਾਸ਼ਾ ਨੂੰ ਬਿਆਨ ਕਰੋਗੇ ਉਹ ਭਾਸ਼ਾ ਦਾ ਰਾਹ ਹੈ ਭਾਸ਼ਾ ਦਾ ਵਿਰੋਧ ਹੈ ਇਹ ਕਹਿਣ ਕੋਈ ਵਿਰੋਧ ਨਹੀਂ ਹੋਇਆ ਸੰਤਪਾਦਰੋ ਵਿਰੋਧ ਉੱਥੇ ਤੱਕ ਤੁਸੀਂ ਮਾਇਆ ਜੀ ਦਾ ਅਪਲ ਦੇ ਸਕਦੇ ਹੋ ਜਿਸਨੇ ਭਾਸ਼ਾ ਦਾ ਵਿਰੋਧ ਨਾ ਹੋ ਉਹਨੂੰ ਫਰਟਾ ਗਏ ਅਸੀਂ ਜਾਗ ਕਹਿੰਦੇ। ਜਾਗ ਵੀ ਆ। ਦੇ ਆ ਗੋਜ ਉਹ ਨੂੰ ਜਗਾ ਰਿਹਾ। ਬੈਕਟੀਰੀਆ ਜਾਗ ਪੈ ਤੁਰੇ। ਜਾਗਣ ਨੂੰ ਜਾਗ ਵੀ ਜਾ ਕੇ ਝੋੜ ਵਾਲੀ ਗੀਤ ਨਾਲ। ਉਹਦੀ ਕੋਈ ਐਸੀ ਚੀਜ਼ ਬਣਾਈ ਜਾਂਦਾ ਤੂੰ। ਇਹ ਜੋ ਕਣ ਅਸਾਦੀ ਨਾਲਿਕੜ ਸਕੋ ਜਗਾਰੇ ਸੰਜਗਾਰੇ ਜਾਗ ਵੀ ਜਾਗਰ ਕੇ ਹਾਂ ਜਾਗਰ ਮਨੇ ਜਵੜੋ ਉਸ ਤੇ ਜਾਗਲੇ ਹੋਰੇ ਮਨੇ ਜਾਗ ਹਾਂ ਇਹ ਜਿਹੜੀ ਸਗਲਪਨਾ ਸੁਤਮਾ ਬੈਸੰਤ ਇਹ ਨੂੰ ਸਮਝ ਗਈ ਕਹਾਣੀ ਗੱਲ ਸਮਝ ਲਈ ਐਟੀਕਲ ਅਸੀਂ ਭਾਈ ਸਾਰੀ ਲੱਸੀ ਐਡ ਕਰਤੀ ਤਦ ਤੋਂ ਉਹ ਯਾਰ ਐਟੀਕਲ ਅਸੀਂ ਤੋ ਐਡ ਕਰ ਲਈ ਉਹ ਪਰ ਉਹ ਜਗਾਤਾ ਬਖਣ ਨੂੰ ਲੱਸੀ ਨੂੰ ਜਗਾਤਾ ਵੀ ਹੋ ਜਾਂਦਾ ਤੇ ਐਡ-ਐਡ ਹੋ ਗਈ ਜਦੋਂ ਵੰਡ ਆਪਣੇ ਰੱਸੀ ਬਈਆ ਡੋਰੀ ਉਹ ਕਰ ਰਿਹਾ ਉਹ ਲੜਾਈ ਤੇ ਰਾਤੀਰੋ ਦੀ ਘਰ ਚ ਕਾਬ ਲੜੀ ਹੋਈ ਸੀ ਨਾ ਆ ਬਾੜੀ ਸੀ ਤਤਲ ਗਿਆਨਬਾਨਾ ਨੇ ਵੀ ਨੌਰ ਰੱਖਿਆ ਉਹਦਾ ਜਾ ਉਹ ਨਾ ਇਹ ਰੱਖੇ ਉਹ ਆ ਆ ਨਾ ਰੱਖਿਆ ਸੱਸੀ ਕਹਿੰਦੇ ਨੇ ਕਹਿੰਦੇ ਲਾਜਾ ਦਾ ਕਰ ਲੈ ਲਾਜ ਰੱਸੀ ਲਾਉਣੀ ਮਿਟਵਾ ਦੇ ਸੁੱਤੇ ਪਏ ਜਿਹੜੇ ਕਹਿੰਦੇ ਨੇ ਸਰਦਾ ਦੀ ਇਹ ਤਾਂ ਜਾ ਕੇ ਇਹਦੇ ਸੋ ਵਿਚਾਰ ਲੰਦੇ ਇਹਨੂੰ ਲੱਸੀ ਨੂੰ ਜਾ ਕੇ ਤੇ ਕਹਿੰਦਾ ਇਹ ਤਾਂ ਚੱਲ ਪੈ ਤੇ ਲੱਸੀ ਆ ਜਾ ਕੇ ਫੜ ਕੇ ਨਹੀਂ ਜਾਂਦਾ ਕੋਈ ਫੇ ਜਾਗੜੇਗਾ ਤੇ ਹੋਰ ਜਿਆਦਾ ਪੀ ਕੇ ਹੋ ਜਾਣਗੇ ਲੱਸੀ ਜਿਆਦਾ ਪੀ ਕੇ ਜਿਆਦਾ ਨੀਂਦ ਹੁੰਦੀ ਇਸ ਕਾ ਦੀ ਲੱਸੀ ਜਿਆਦਾ ਨਹੀਂ ਪੀਣੀ ਚਾਹੀਦੀ ਨੀਂਦ ਆਉਂਦੀ ਆ ਗੁਰੂ ਮਗੇ ਜਾਗੇ ਦੀਦਲੋ ਸੋਵੇ। ਕੋਈ ਕਰਦੀ ਕੋਈ। ਵਿਝੜੂ ਵੀ ਉਹ ਇਦਾਦ ਕੁੱਪੀ ਚੜਦਾ। ਉਹ ਚੰਚਲ ਵਖੜਦਾ ਹੀ ਗਾ ਲੋ। ਆਹ ਤਾਂ ਹੀ ਸਮਾਧੀ ਕਰਦਾ ਲੋ। ਮਾਈ ਗੁਰੂ ਵਾਣੀ। ਖੇਲ ਤੇ ਖੇਲ ਤੇ ਆਇਓ ਪਾਏ। ਅਨਕ ਮਿਟੇ ਸਾਧੂ ਮਿਲਤ ਸਤਗੁਰ ਬਚਨ ਅਸਲ ਦੇ ਮਾਇਆ ਚੜ੍ਹਦੀ ਗਰ ਵਿੱਚ। ਇਹਦੀ ਨੂੰ ਲੋੜ ਪਈ ਕੀ ਚੀਜ਼ ਦਾ? ਇਹ ਗੱਲ ਸਬਕਤ ਵਾਸਤੇ ਪੂਰੀ ਜ਼ਿੰਦਗੀ ਚਾਹੀਦੀ। ਐਨਾ ਨੂੰ ਇੰਤzar ਹੋਈ ਜਾਂਦਾ। ਮਾਰਗੰਦ ਦੇ ਵਿਚਰੋਂ ਛੇਤੀ ਛੇਤੀ ਪ੍ਰਪਤਾ ਚੜਹੀ ਗਈ। ਤਦ ਇਹ ਆਫ ਦੀ ਕਾਲੀ ਐ ਫਿਰ ਉਹਨਾਂ ਨੇ ਲੈਣਾ ਕੀ ਐ ਉਹਨਾਂ ਨੇ ਦੁਨੀਆ ਬਗਲ ਆਉਣੀ ਐ ਉਹਨਾਂ ਨੇ ਗੱਲ ਵੀ ਫਿਰ ਸੰਸਾਰ ਦੀ ਕਰਨੀ ਐ ਗੱਲ ਵੀ ਕਰਨੀ ਹਾਂ ਤੇ ਇਹ ਕਹਿ ਰਿਹਾ ਇਹਦਾ ਜੀ ਬਹੁਤ ਔਖਾ ਇਹ ਇਹ ਕਹਿ ਰਿਹਾ ਉਹਦੇ ਬਣਾ ਸਰਦਾਰੀ ਇਹਦੇ ਬਣਾ ਸਰਦਾਰ ਕਹਿੰਦੇ ਵੀ ਗੱਲਾਂ ਪਿਆਰ ਛੱਡੋ ਇਹ ਕਿੱਥੇ ਜੀ ਇਹਦੇ ਬਦ ਸਰਦਾਰ ਇਹਦੇ ਬਨਾਸਾਲ ਲੜ ਕੇ ਉਹਦੇ ਵੇਰ ਸਦਾ ਇਹਦਾ ਉਹਦੇ ਵੇਰ ਨਹੀਂ ਦੇ ਸਦਾ ਮਾਇਆ ਵੀ ਉਹ ਨਹੀਂ ਸਰਦਾ ਉਹ ਮਾਇਆ ਕਿ ਉਹ ਛੱਡੂਗਾ ਪਰ ਐਂਕ ਛੱਡੂਗਾ ਉਹਨੇ ਤਾਂ ਪਹਿਲੇ ਦਿਨ ਹੀ ਕਹਿਤਾ ਵੀ ਮਾਇਆ ਛੱਡਵਣੀ ਤਾਂ ਗੱਲੇ ਦਾ ਜਰ ਜ਼ਰ ਜ਼ਰ ਹੈ ਕਿ ਕੱਲੇ ਮਾਇਆ ਛੱਡਣ ਲਈ ਬੜੂ ਖੂਬ ਤੋਂ ਪੁਨੀਆ ਵਿੱਚ ਲਾਭ ਲੋਭ ਉੱਤਪਾਦ ਪਹਿਲਾ ਸਟੈਪ ਇਹ ਕਰਤਾ ਸਰਦਾਰੀ ਜੀ ਮਾਇਆ ਬਿਰੋ ਮਾਇਆ ਦੀ ਜੇ ਇਹਦੇ ਸੋਟ ਦਾ ਕੋਈ ਫਾਇਦਾ ਨਹੀਂ ਦੱਸਣ ਦਾ ਫਾਇਦਾ ਉਹਨਾਂ ਤਾਂ ਪਹਿਲਾਂ ਘਾਟਾ ਵਾਰਤਾ ਅਸਲ ਇਹ ਉਹਨਾਂ ਨੇ ਬੋਰਡ ਤਾਂ ਲਾਇਆ ਇਹ ਬੋਰਡ ਲਾ ਕੇ ਉਹਨੇ ਫੁੱਟ ਪਾ ਕੇ ਇਸ ਮਾਇਆ ਵਿੱਚ ਆਪਣੀ 450 ਕਰ ਸਾਡੀ ਇਹਦੀ ਸਟੈਂਥ ਹੈ ਇਹਦੇ ਬੱਧੇ ਵੇਖ ਗਾਣੇ ਕਿਸੇ ਕੋ ਦਾ ਹੀ ਕੰਮ ਕਰਦਾ ਇਹ ਕਟਿਸਟ ਕੋ ਕੀ ਸਿਤ ਵੀ ਉਹ ਦੇ ਦਾ ਲੀਡਰ ਬਣ ਕੇ ਐਮਪੀ ਬਣ ਗਿਆ। ਥੋੜਾ ਗੱਲੇ ਦੇ ਚੱਕੇ ਲਾਤਾ ਸੀ ਪਿੱਛੇ। ਉਹ ਤੇ ਹੋ ਗਏ। ਫੋੜ ਫਿਰ ਮੂਵਮੈਂਟ ਸ਼ੁਰੂ ਹੋ ਗਿਆ। ਉੱਠ ਕੇ ਉਹਨਾਂ ਕੇ ਬਿਆਦੀ ਕੁਰਸੀ ਪੱਕੇ ਹੋ ਗਈ ਉਹ ਲੋਕ। ਉਹਦੀ ਕੁਰਸੀ ਗਈ ਫਿਰ ਮੂਵਮੈਂਟ ਸ਼ੁਰੂ ਹੋ ਗਿਆ। ਇਹ ਲੋਕ ਜਿਹੜਾ ਸਰਕਾਰ ਇਹਦੇ ਨਾਲ ਉਹ ਕੀ ਮਤਲਬ? ਇਹ ਜੋੜਦੀ ਹੈ। ਸੰਸਾਰ ਨੂੰ ਸੰਸਾਰ ਸਮਾਜ ਨੂੰ ਉਹ ਤੋੜ ਦੇ। ਤਰੇ ਤੋੜ ਨਾਲ ਟੁਕੜੇ ਟੁਕੜੇ ਕਰ ਦੜੇ ਪਹਿਲਾਂ ਵਰਲਡ ਨੂੰ ਦੋਸਤਾਂ ਕੀਤਾ ਫਿਰ ਦੋਸਤਾਂ ਨੂੰ ਪਾਕਿਸਤਾਨ ਨਾਲ ਅਟਕੀਤਾ ਪਾਕਿਸਤਾਨ ਨੂੰ ਫਿਰ ਹਰਜ਼ਾ ਦੇ ਕੀਤਾ ਪੰਜਾਬ ਨੂੰ ਤਰਨ ਤੋਂ ਅਟਕੀਤਾ ਹੁਣ ਪੰਜਾਬ ਨੂੰ ਵੀ ਹੋਰ ਜ਼ਿਆਦਾ ਅਟਕਣ ਦੀ ਲੋੜ ਪਵੇ ਮਲਬਾ ਦੋਬਾ ਤੇ ਹੋਰ ਜ਼ਿਆਦਾ ਦੀ ਲੋੜ ਪੈ ਜਾਣੀ ਹੋਵੇ ਫਿਰ ਮਲਬੇ ਦੇ ਵੀ ਦੋ ਹਿੱਸੇ ਕਿ ਆਈਦੇ ਨੇ ਪਰ ਨੈਰਾ ਵਾਲਾ ਅਟਾ ਕੀ ਪਤਾ ਕੀ ਕੀ ਹੋਊਗਾ ਦਵੀਜ਼ੇ ਨੂੰ ਹੁਤੇ ਹੁੰਦੇ ਹੁੰਦੇ ਉਹਦੀ ਚੇਤਰਵਾਰਾਡ ਕਰਦੇ ਬਾਹਰ ਵੱਡੀਆਂ ਪੌਦੇ ਪੌਦੇ ਜਾਂ ਧੱਕੇ ਜੋਤ ਵੀ ਹੱਡ ਕਰਦੇ ਹਨ ਇਹਨਾਂ ਵਿੱਚ ਆਪਣੇ ਆਪ ਨੂੰ ਇੱਕੋ ਦਿੰਦਾ ਉਹ ਜਿਹੜਾ ਇੱਕ ਤੇ ਦੁਖਲਾ ਹੁੰਦਾ ਦੁਖਿਤ ਕਿੱਕਰ ਹਜ਼ਾਰ ਦੁਖਲਾ ਇਹ ਨਹੀਂ ਮਾਨਸ ਦੀ ਯਾਦ ਕਹੀ ਇਹ ਨਹੀਂ ਇਮਾਨਤ ਦੀ ਯਾਦ ਕਰੇ ਮਨੁੱਖਾਂ ਦੀ ਬਿਲਕੁਲ ਇੱਕਾਂ ਬਾਅਸ ਅਸਲ ਇਥੇ ਮਾਨਸ ਕੀ ਜੋਗ ਇਥੇ ਬਾਅਸ ਦੀ ਗੱਲ ਜਿਹੜੀ ਇਥੇ ਹੈ ਬਹੁਤ ਜਿਹੜਾ ਬਹੁਤ ਸਾਰੇ ਜੀ ਬਾਸ ਕਹਿੰਦੇ ਅਸੀਂ ਬਾਸ ਬਾਸ ਬਾਸ ਫੂਰੀ ਮੇਂ ਵਿਦਾ ਬਾਸ ਬਹੁਤ ਕਦੇ ਮੁੱਖ ਦੀ ਗੱਲ ਨਹੀਂ ਹੈਗੀ ਇੱਥੇ ਮਾਨਸ ਸਾਹਿਬ ਜਿੰਨਾ ਵੀ ਬਾਸ ਹੈ ਹੈ ਤਾਂ ਮੁੱਖ ਦੀ ਹੋ ਗੱਲ ਹੂੰ ਕੁਕਾ ਗਪਲੇਬ ਵਰਤੇ ਇੱਕ ਗਪਲੇਬ ਸੋਬਾ ਇੱਥੇ ਪਹਚਾਣ ਬਹੁਤ ਸਲੇ ਵਿੱਚ ਸਾਰੇ ਜਾਨਵਰ ਵੀ ਆ ਗਏ ਸਨ ਜਨਾ ਬਾਸ ਹੂੰ ਇਸਤਰੀ ਦੀ ਗੱਲ ਕਰੇ ਤਾਂ ਨਾ ਆ ਗਿਆ ਉਹ ਚੁਪ ਲਿਖ ਪੁਲਿੰਗ ਤੇ ਉਹਨਾਂ ਦੀ ਯਾਦ ਇੱਕ ਨਹੀਂ ਹੈ ਜਿਹੜਾ ਮਾਦਾ ਕਿਰਦਾਂ ਦੀ ਮਾਦਾ ਹੈ ਉਹ ਦੋਰੀ ਵਿੱਚ ਤੁਸੀਂ ਇਹ ਸਮਝਦੇ ਹੋ ਵੀ ਇਸਤਰੀ ਆ ਦੋ ਦੋਰੀ ਬਦੇ ਬਰੇ ਕੋਈ ਨਹੀਂ ਜੋ ਤੱਕ ਬਾਸ ਦੀ ਗੱਲ ਹੈ ਬਾਸ ਦੀ ਗੱਲ ਹੈ ਦੋਹਾਂ ਤੋਂ ਬਨਾਸ ਫਾਇਦਾ ਕੀ ਜਿਵੇਂ ਰੁੱਖ ਜਿਵੇਂ ਕੁਲਮਾਪਾ ਜੜਾ ਅਟ ਕਰਦੀਏ ਜੜਾ ਨਾ ਤਵਾਂ ਅੜਣੀ ਕਰਦੀ। ਪਤਲਾ ਸਟਾਰਟ ਕਰਦੀਏ ਕਿ ਉਹ ਫੜ ਲੱਗ ਸਕਦਾ। ਜਿੰਨਾ ਕਿ ਧੱਕੀ ਵਿੱਚ ਖੜਾ ਸੀ ਰੁੱਖ ਫੜ ਦੇਣ ਵਾਲਾ। ਉਹ ਲੱਗ ਰਹੇ ਇਸਤਰੀ ਵਰਖ ਤੋਂ ਇੱਕ ਸਿੱਕ ਜਗਾ ਸੀ। ਹੂੰ। ਫੜ ਸੀ। ਫੜ ਜਿਹੜੇ ਫੁੱਲ ਲੱਗਦੇ ਸੀ। ਬਾਰੇ ਮਦੀ ਦੇ ਕੋ ਬੂਟੇ ਲਾਦੇ ਸੀ ਬਾਲੇ ਫੋਰਨ ਆ ਰੁਦੀ ਸੀ ਪਰ ਬੂਟੇ ਇਕਰੂ ਲਾਦੇ ਸੀ ਇਹੋਲੇ ਦੋ ਬੂਟੇ ਦੋ ਦੋ ਕਿ ਕਾ ਬੂਟਾ ਦੋ ਜਰੂਰ ਪਾਉਣੀ ਪੈਗੀ ਜੋਤਾ ਦੋ ਦੋ ਪਾਉਣੀਆਂ ਪੈਗੀਆਂ ਗੱਲ ਉੱਥੇ ਜੋ ਉੱਥੇ ਇਕ ਹੈ ਉੱਥੇ ਜੋ ਹੈ 加ਦੇ ਤੁਰ ਲਗਾ ਗਿਆ ਧਰਤੀ ਤੇ ਜਦੋਂ ਧਰਤੀ ਦੇ ਵਿੱਚ ਜੜ ਸੀ ਉਹਨੂੰ ਚਿਰਕ ਰੋਣ ਸਹੀ ਗਿਆ ਫੁੱਲ ਗੋਦੋ ਕਰਨਾ ਪੈਂਦਾ ਬੇ ਧਰਤੀ ਕੋ ਖਾਂਦਾ ਧਰਤੀ ਜੋ ਇਹ ਤੁਰ ਲਗਾ ਜਦੋਂ ਧਰਤੀ ਦਾ ਆਟੋ ਹੋ ਆਟੋ ਤੁਰ ਲਗਾ ਚਾਹੇ ਹਾਂ ਤੁਰ ਲਗਾ ਗਿਆ ਉਦੋਂ ਦੋ ਦੋ ਦੋ ਹੀ ਰੋੜ ਦੇ ਹੁਣ ਅਸਪਤ ਦੀ ਇਹ ਰੋੜ ਦੋ ਤਸਵੀਰ ਅੱਡਣਾ ਬਾਕੀ ਇਹ ਤਾਂ ਫਿਰ ਅੱਡ ਲੋਡ ਬੈ ਗਈ ਹੈ ਹੈ ਜੇ ਮੈਂ ਪੁੱਤਿੱਤਾ ਜੀ ਹੋਮ ਦਰਖਤ ਵੀ ਨੇ ਕਣਾ ਇਹ ਕਿਹ ਗੱਲ ਦਾ ਕੋ ਸਮਝਣ ਵਾਲੀ ਇਹ ਮਾਨਸ ਕੀ ਜਾਦ ਕੋਈ ਹੈ ਉਥੇ ਮਾਨਸ ਕਿਹਾ ਅ ਬਾਣ ਆ ਨੀਗਾ ਕੋਈ ਹੈ ਇਹ ਕੱਲ ਪੁਲਿੰਗ ਦੀ ਝਲੂਗੀ ਹੋਰ ਬਣਲੀ ਤੇ ਤੇ ਮੁੰਨਾ ਗਿਆ ਵੀ ਤਾਂ ਵੀ ਤਾਂ ਵੀ ਬੁਲੇ ਤਾਂ ਜੇ ਵੀਰ ਮੁਕਤਾ ਫਿਰ ਵੀ ਮੱਛਲੀ ਆ ਜਲ ਦੀ ਮੱਛਲੀ ਉਥੇ ਇਸਟਰੀ ਲਿੰਗਾ ਮੱਛਲੀ ਤਰਵਰ ਵੇ ਆਇਆ ਦੀ ਉੱਥੇ ਕਿ ਮੱਛੀ ਜਿਹੜਾ ਕਿ ਉੱਥੇ ਸੁਰਤ ਦੀ ਗੱਲ ਹੈ ਭਾਈ ਇਹ ਸਹੀ ਹੈ ਉੱਥੇ ਮੱਛੀ ਦੀ ਗੱਲੇ ਨਹੀਂ ਬਾਹਰ ਆਇਆ ਮੱਛੀ ਕਹਿੰਦੇ ਉਹ ਵੈਸੇ ਵੈਸੇ ਲੈਂਦਾ हकीये दाव गल दसया हतरी दाव गल दसया हतरी दाव गल दसया ओ विचै आ गया सर दुकान ना ना।, ना।, ना ना थी नहीं, है, है, है। नहीं हम लोग गलियाद भी वासे हूं फिर गलदा दसया पतंद दा दसया थोड़ी मिनट सर ये पांच दुख असात जान ताकी ਇਸੇ ਜੋ ਦੁਆਰ ਜਿਹੜੀਆਂ ਕੁਝ ਜੀ ਤੁਸ ਤੁਹਾਨੂੰ ਦੱਸਿਆ ਦੱਸਿਆ ਕੁਝ ਜੀ ਦੱਸਿਆ ਗੁਰੂ ਵੀ ਕੀ ਜੀ ਕੁਝ ਜੀ ਦੱਸਿਆ ਫਿਰ ਉਹ ਜਿਹੜੀ ਦੁਰਵਤਾਲ ਕੁਝ ਜੀ ਹੈ ਆਹ ਹੋ ਗੱਲ ਕੀਤੀ ਹੈ ਤੁਹਾਨੂੰ ਮਾਤਤੀ ਗੱਲ ਹੈ ਉਹ ਜਿਹੜੀ ਉਹਨੇ ਪੈਦਾ ਕੀਤੀ ਹੈ ਉਹਦੀ ਗੱਲ ਗਵੇਕ ਵਵੇਕ ਤੋਂ ਗਵੇਕ ਬੁੱਧ ਪੈਦਾ ਹੋਇਆ। ਮੂਰੂਫ ਦੇ ਵਿਚ ਚ ਪੁਲੇ ਦੇ ਹਨ। ਗੁਰੂ ਲਾਭੁ ਪਲੇਦ। ਸਾਧ ਗੁਰੂ ਪਲੇਦ ਗਾਇ ਇਸੇ ਵਾਰਤਾ ਨਹੀਂ ਪਟਿਆ ਜਾ ਸਕਦਾ। ਗੁਰੂ ਨਹੀਂ ਵਰਤਿਆ ਜਾ ਸਕਦਾ। ਗੁਰੂ ਲਾਭੁ ਪਲੇਦ ਉਹ ਜਨਾਨੀ ਨੂੰ ਕਹਿੰਦੇ ਨੇ ਉਹ ਕਹਿੰਦੇ ਨੇ ਗੁਰੂ ਮਾ ਲਭਜੋ ਫੁਲੇ ਗੇ ਕਰ ਰਹਾ ਨਾ ਮੂਰੇ ਗੁਰੂ ਗਲਤ ਕਹਿ ਰਹੇ ਨਾ ਲਭਜਾ ਹੀ ਨਹੀਂ ਦਾ ਮਣ ਕੇ ਜੀ ਸ੍ਰੀ ਬਾਤ ਕੋਈ ਲਭਜੇ ਨਹੀਂ ਗੁਰੂ ਲਭਜੇ ਨਹੀਂ ਹੈ ਗੁਰੂ ਘਰ ਫੁਲੇ ਸੰਤ ਨਹੀਂ ਬਣਾਇਆ ਜਾਂ ਸਿੰਘ ਤੋਂ ਸਿੰਘਣੀ ਬਣਾਇਆ ਹੈ ਉਹ ਬਣਾ ਲਾ ਸਾਧਨੀ ਬਣਾਇਆ ਹੈ ਯਾਨੀ ਕਿ ਲਭਜ ਜਰਾ ਜਰਾ ਇਹ ਬੜਾ ੜਾੜਾ ਵੇਜ ਦਾ ਖਾਣਾ ਤੇ ਆਹ ਬੋਲਣਗੇ ਰਾਸ਼ਟਰਪਤੀ ਰਾਜੀ ਦੂੰ ਜੇ ਉਹ ਰਾਸ਼ਟਰਪਤੀ ਕਹੀ ਰਾਜਤ ਬਣਦਾ ਹਥਿਆਰੇ ਪਤੀ ਦਾ ਅਰਥ ਰਾਸ਼ਟਰਪਤੀ ਆ ਪਤੀ ਪਲੇ ਕੋਦ ਪਤੀ ਆਦਮੀ ਹੋ ਸਕਦਾ ਹੈ ਔਰ ਪਤਨੀ ਵੀ ਹੋ ਸਕਦਾ ਹੈ ਔਰ ਤਫਦਲੀ ਪਤਨੀ ਹੋਣਾ ਪਤਾ ਨਹੀਂ ਹੈ ਤੇ ਜਦੋਂ ਪਤੀ ਕਹਿੰਦਾ ਪਤਨੀ ਲੱਗੇ ਤੇ ਮੂਰਖ ਹੈ ਕਰਦੇ ਨੇ ਪਰਵਾਨ ਮੂਰਖ ਹੈ ਪਤਾ ਨੂੰ ਲੱਗ ਗਿਆ ਬਾਈ ਪਤਾ ਮਹਿਸੂਸ ਕਰ ਲਿਆ ਵੀ ਪਿੱਛੇ ਹੈ ਨਹੀਂ ਸੀ ਇਹ ਹੂੰ ਕਿਉਂ ਨਹੀਂ ਸੀ ਇਹ ਵੀ ਪਤਾ ਲੱਗ ਗਿਆ ਬਰਾਬਰੀ ਦੇਣਗੇ ਔਲਾਦ ਪਹਿਲਾਂ ਹੁੰਦੀ ਹੈ ਗੋਦ ਦਾ ਕਿਉਂ ਚਲਦਾ ਪਾਬ ਦਾ ਗੋਦ ਕਰੀ ਚਲਦਾ ਵਾਹ ਤਾਂ ਕਰੀ ਚਲਦਾ ਨਾਲ ਵਾਹ ਦਾ ਕਿੱਲੇ ਪ੍ਰੋਬਲਮ ਹੋਊ ਇਹ ਜਦ ਬੱਚੇ ਦੇ ਬੱਚੇ ਦੇ ਕੋ ਦੋ ਹੋ ਗਏ ਸਲਾਮ ਲੜਕੀ ਦੇ ਵੀ ਲੋਗੇ ਲੜਕੇ ਦੀ ਕਾਂ ਆਲੇ ਦੇ ਚਾਰ ਚਾਰ ਚਾਰ ਅੱਠ ਹੋ ਗਏ ਕੋਈ ਕੋਈ ਬਣ ਜਾ ਕਿ ਕੋਈ ਬਣ ਗਿਆ ਹਾਂ ਹਾਂ ਕਿਵੇਂ ਚੱਲਣਗੇ ਇਹ ਖੜ ਜਾਂਦੇ ਜੇ ਛੇਤੀ ਉਹ ਪਾਗਲ ਜੀ ਜਿਹੜਾ ਇਹਨੂੰ ਪਿੱਛੇ ਕੀਤਾ ਸਿਆਣੇ ਚੁੱਪ ਕਰ ਜਾ ਤੂੰ ਇਹਨੂੰ ਦੋ ਆਪੇ ਵਾਝਾ ਦਿੰਦੇ ਮੁਰਖੇ ਰਣਾ ਲੂਜੀਏ ਪੜਖਰੇ ਹੋ ਬੁਜੀਏ ਉਰਜਲ ਦੀ ਲੋਡ ਨੂੰ ਆਪੇ ਫਾਇ ਜਾਣਾ ਆ ਜਾਗੇ ਫਸੇ ਖੜੇ ਨੇ ਸਾਰੇ ਵਿਦਵਾਨ ਅਰਥਾ ਚ ਅਪਰ ਕਹਿਣ ਦੀ ਲੋਡ ਨਹੀਂ ਬੋਲਰ ਦੀ ਲੋਡ ਨਹੀਂ ਫਸੇ ਤਾਂ ਆਪੇ ਬੈਠੇ ਨੇ ਉਹਨਾਂ ਰਾਹ ਹੀ ਜਾਉਦੇ ਰਾਜਮਾਉਂਡਰ ਨਾਲ ਉਹਨੂੰ ਗਿਤਾ ਨਰੋਡ ਸਰ ਰੋਡਾਂ ਚੱਟੀ ਹੜਦੇ ਵੀ ਪੜ੍ਹਾਉਂਦਾ ਕਰਦਾ ਸੀ ਉਹ ਉਹ ਕਹਦਾ ਦੋ ਰੇ ਕਹਿੰਦੇ ਆਪਣੇ ਇੱਕ ਹੌਲੇ ਦੋ ਰੇ ਸੱਤਾਂ ਦੇ ਦੋਰੇ ਆਪਣੇ ਸੱਤਰ ਜਦ ਤੱਕ ਦੂਈਏ ਦੋ ਤੇ ਬਿਰੋ ਦਾ ਸਰਦਾ ਹੀ ਨਹੀਂ ਹੈ ਉਹ ਨਾ ਨਹੀਂ ਸਰਦਾ ਮਾਇਆ ਮਰੋ ਦੂਈ ਬਿਰੋ ਤੱਕਾਂ ਨੇ ਸਰਦਾ ਨੇ ਦੂਈ ਬਿਰੋ ਆਪਣਾ ਸਰਦਾ ਉਹਦਾ ਸਰਦਾ ਜਿੱਥੋਂ ਦੋਰ ਹੈ ਇਹ ਨਾਲ ਸਰਦਾ ਨਹੀਂ ਆਇਆ ਬਿਰੋ ਆਇਆ ਚੱਡਲ ਕੇ ਚੜੂ ਦਾ ਉਹ ਜਿਹਦਾ ਸਰਦਾ ਭਾਵੇਂ ਹਾਲ ਤੇ ਕਾਢੋ ਤਾਂ ਉਹ ਜਿਹੜਾ ਮਾਇਆ ਜਿਹਨੂੰ ਮਾਇਆ ਦੁਖੀ ਕਰਦੀ ਹੈ ਜਿਹੜਾ ਬੰਦੂ ਦੁਖੀ ਹੋ ਗਈ ਤਾਂ ਮਾਇਆ ਉਹ ਰਾਮੇ ਹੋਣਾ ਜਿਵੇਂ ਆਇਆ ਸੁਗੜਾਇਕ ਲੱਗਦੀ ਓ ਕਸ਼ਡੂਆ ਦੁਕਦਾਇ ਰੇਦੀ ਤੁ ਲੱਗਦੀ ਓ ਸੇ ਅਰੇ ਖੇਲ ਤੇ ਖੇਲ ਤੇ ਆਇਓ ਅਨਕ ਜੋਨ ਦੁ ਪਾਏ ਇਹਦੇ ਲੱਗ ਜਾਂਦਾ ਉਹ ਦੁੱਧ ਤੇ ਛੱਡ ਦੂ ਉਹਨਾਂ ਦਾ ਬਾਂਡੀ ਪਾੜੀ ਸਾਰੇ ਲੱਗ ਜਾਂਦਾ ਸੁਣਦੀ ਸਾਰੇ ਵਟਾਉਣ ਲੱਗ ਜਾਂਦੇ ਇਹਨੂੰ ਤਾਂ ਜਾਂਦਾ ਮੈਨੂੰ ਨਹੀਂ ਫਟੇਗਾ। ਡਾਕਟਰ ਹਾਂ ਤੂੰ ਰੋਤੀ ਕਰ ਲੈ। ਫਿਰ ਨਹੀਂ ਸਾਰਾ ਉੱਟੀ ਕਰਦੇ ਕੀ ਫਿਰ? ਹੋਰ ਪੜ੍ਹਨ ਦੇ। ਹਾਥੀ ਦਾ ਦੋਬ ਤਸਿਆਥੇ ਜਿਹੜਾ ਦਾ ਦੱਸਿਆ। ਕਾਲਬੂਤ ਗਿਆ ਸਣੀ ਬਲਬੋਰਾ ਕੀ? ਕਾਲਬੂਤ रेडी कल्पना नो कालभूत के आज कालभट मुख दे की हसली बन भौरा रे अंकल साहब से अंकल साहब से ताओ थे हुकुम दा कुर्ता हणा पईदा ना एना चढ़ा कल्पना दा ते कसीस रे पईदा ओथे हसली के कल्पना ने फरमाया स्त्री ने माया रूप में ਅਸਲ ਵਿੱਚ ਉਹ ਸਭ ਜਿਹੀ ਗੱਲ ਮੇਰੇ ਕੋਲ ਰੁਕ ਗਈ। ਮਾਇਆ ਦਾ ਨਹੀਂ ਹੈ। ਉਹ hindu ਮਦਰਾ ਸਹੀ ਮੰਨੇ। ਮਨੇ ਨਾ ਜਿਹੜਾ ਨਹੀਂ ਬੱਦਿਆ ਜੋ ਪੜ ਪੈਦਾ ਕਰਨੀ ਕੀਤੀ ਉਹ ਕੱਢੀ ਗਏ ਤੁਸੀਂ। ਪਰਮ ਪੈਦਾ ਕਰਨੀ ਕੀਤੀ। ਦੌਰ ਆਦਮੀ ਦੇ ਵਿੱਚ ਜੋ ਚੀਜ਼ ਪੈਦਾ ਹੁੰਦੀ ਹੈ ਉਹ ਪੈਦਾ ਹੁੰਦਾ ਆਦਮੀ ਦੇ ਜੋਤ ਆਦਿ ਜੋਤ ਵਿੱਚੋਂ ਜੋ ਚੀਜ਼ ਪੈਦਾ ਹੁੰਦੀ ਹੈ ਇਹਦੇ ਧਿਆਨ ਚੋਂ ਜੋ ਪੈਦਾ ਹੁੰਦਾ ਹੈ ਕਹ ਲੋ ਆਦਿ ਧਿਆਨ ਚੋਂ ਇਹਦੇ ਧਿਆਨ ਚੋਂ ਪੈਦਾ ਹੁੰਦਾ ਨਾ ਆਦਮੀ ਦੇ ਧਿਆਨ ਚੋਂ ਪੈਦਾ ਆਦਮੀ ਦਾ ਜਿਹੜਾ ਧਿਆਨ ਹੈ ਉਹ ਚ ਬਣਦਾ ਲਓ ਪੈਦਾ ਦੀਵਾ ਦਰਵਾਜ਼ੇ ਤੇ ਜੋ ਲੋਕ ਹੈ ਆਦਮੀ ਜੇ ਆਪਣਾ ਧਿਆਨ ਧਾਰਦਾ ਨਾ ਤਾਂ ਉਹ ਤੇਲ ਤੰਦ ਰੋ ਕੇ ਰਹਿੰਦਾ। ਸਮਝ ਲਈ ਆਦਮੀ ਜੇ ਧਿਆਨ ਆਦਮੀ ਦਾ ਧਿਆਨ ਤੋਂ ਮੇਰਾ ਮਤਲਬ ਕਹਿੰਦਾ ਉਹ ਹੈ ਆਤਮ ਧਿਆਨ। ਉਹ ਹੀ ਆਦਮੀ ਦਾ ਧਿਆਨ ਹੋਇਆ। ਆਦਮੀ ਦਾ ਧਿਆਨ ਆਪਣੇ ਉੱਪਰ ਕੇਂਦਰਿਤ ਹੁੰਦਾ। ਸਮਾਜ ਪਰੋਂ। ਬਾਹਰ ਹੈ। ਹਾਂ ਬਾਹਰ ਉਰੇ ਉਰੇ ਕਾਲ ਬੂਤ ਕੇ ਹੱਥੀ ਪੈਗਾਮ ਦੀ ਉਹ ਜਿਹੜਾ ਨਾਮ ਪੈਦਾ ਹੁੰਦਾ ਉਹ ਐ ਸੰਸਾਰ ਦੇ ਸਾਰੇ ਜੀਵਾਂ ਨੂੰ ਬੁਖਤ ਕਰਕੇ ਇਸ ਸੰਸਾਰ ਨੂੰ ਖਤਮ ਕਰ ਰਿਹਾ ਹੈ ਖਾਲੀ ਕਰਨਾ ਚਾਹੁੰਦਾ ਅਗਲਾ ਜਨਮ ਪਟੜੋਲ ਵਿੱਚ ਹੋਵੇ ਜੇ ਅਗਲਾ ਜਨਮ ਬਿੜ ਚੋਵੇ ਔਰ ਤੀ ਲੋੜੇ ਲੋੜੇ ਨਾ ਉਤਲ ਉਤਲ ਕੇ ਆਈ ਹੈ ਨਾਲ ਕੇ ਕੇ ਬਾਹਰ ਆ ਜਾ ਇੱਕ ਇੱਕ ਬਾਹਰ ਖਲੋ ਇੱਕ ਸੰਸਾਰ ਨੂੰ ਭਰ ਪੈ ਪਤਾ ਪਾਣੀ ਪਾ ਰਿਹਾ ਟੋਟੀ ਚ ਉਹਨਾਂ ਕਟੰਗ ਦੀ ਇੱਕ ਪੈ ਪਾਣੀ ਪਾ ਰਿਹਾ ਇੱਕ ਆਦਮੀ ਢੋਲ ਰਿਹਾ ਉਹਨਾਂ ਬਾਟੀ ਪਰ ਦੋਹਾਂ ਦਾ ਕੰਮ ਆਪਾ ਬਰੁਦੀ ਹੈ ਆ ਫੌਰਤ ਨਹੀਂ ਲੱਗਦਾ ਕੋਤੂ ਵੀ ਆਦਮੀ ਇਹ ਤੀਨ ਦਿਨ ਸੱਬੇ ਆਪਾ ਬਰੁਦੀ ਕੋਈ ਪੈ ਆਦਮੀ ਜਿਹੜਾ ਪਾਣੀ ਪਾ ਰਿਹਾ ਕਿਉਂ ਢੋਲਣਾ ਹੋਵੇ ਕੋਲ ਛੱਡ ਕੇ ਢੋਲੂਗਾ ਉਸੇ ਨੇ ਕੰਮ ਕਰਨਾ ਹੋਵੇ ਉਸੇ ਨੇ ਕੰਮ ਕਰਨਾ ਤਾਂ ਉਹਨੂੰ ਪੌਣਾ ਬੰਦ ਪਹਿਲਾਂ ਕਰਨਾ ਪਊਗਾ ਤਾਂ ਡੋਲੂ ਆਦਮੀ ਦੇ ਵਿੱਚੋਂ ਜਿਹੜਾ ਦੁੱਧ ਪੈਦਾ ਕਹਿੰਦਾ ਫਰੀਦ ਦੁੱਧ ਹੈ ਥੜੀ ਨਾ ਆ ਵੀ ਆ ਵੀ ਕਿਉਂ ਦੁੱਧ ਹੈਨਾ ਕੋਦੇ ਤੋਂ ਤਾਂ ਉਹਨੇ ਦੂਆ ਪਾਇਆਗਾ ਉਹਦੇ ਉਹ ਤੋਂ ਤਾਂ ਉਹਦਾ ਹੀ ਰਹਿਣਾ ਸ਼ਰੀਰ ਨੂੰ ਚਾਹੀਦਾ ਇਹ ਸ਼ਰੀਰ ਵਾਸਤੇ ਉਹਨਾਂ ਹੱਥੋਂ ਵਸ ਇਹਨੂੰ ਇਹਦੇ ਤੋਂ ਤਾਂ ਉਹਦਾ ਹੀ ਰਹਿਣਾ ਵਸ ਤੋਹਦੀ ਆ ਡਾਡੇ ਰਿਹਾ ਅੱਛਾ ਇਹ ਹੀ ਤੁੱਤ ਦੀ ਗਾਣਾ ਉਹਨੇ ਵੀ ਇਹ ਅਸਰ ਜਿਤ ਜੀਵਾਤ ਦਾ ਲਗਦੀ ਧੀਰੇ ਧੀਰੇ ਉਹਦੇ ਤੋਂ ਦੂਰ ਜਾ ਰਿਹਾ ਵਿਚਪਾਨਾਂ ਦੀ ਇੱਥੇ ਤੱਕ ਕੁਕੜੀ ਗੱਲਾਂ ਕਰਦੇ ਨੇ ਆਕਾਸ਼ ਸੁਣ ਗੱਲਾਂ ਆਕਾਸ਼ ਕੀ ਨੂੰ ਵੀ ਇੱਥੇ ਤੱਕ ਪਾ ਲੀਏ ਮਾਰਨਗੇ ਏ ਜਦੋਂ ਅਗੇ ਜਮੇ ਜੀ ਨਿਕਲੂਦ ਜਿਹੜੇ ਹੈ ਬਿਲਕੁਲ ਐਸੇ ਬਿਲਕੁਲ ਜੇ ਉਹਨੇ ਇਹ 10 ਦਵਾਰ ਬੰਦ ਹੋਵੇ 10 ਦੇ ਨੇ ਕਰਦਾ ਆਹ ਫੇਰ ਉਹ ਦੰਦ ਬੰਦ ਕਰਕੇ ਅਗਲੇ ਜੰਤ ਕੇ ਤਾਂ ਇਹਨਾਂ ਨੂੰ ਨਾ ਨਾ ਨਾਰੇ ਵਿੱਚ ਸਾਰੇ ਦੀਆਂ ਸਾਰਿਆਂ ਜਿਹੇ ਹੀ ਦੇ ਆਹ ਭਾਈਆਂ ਦੀ ਮਟਰ ਦਾ ਦਾਣਾ ਗਿਆ ਨਾਲ ਕੰਪਲੀਟ ਨਹੀਂ ਬਣਿਆ ਉਹ ਵਿਚੋਂ ਕੱਢ ਕੇ ਬੀਜ ਦੀ ਜਗ੍ਹਾ ਤੇ ਜੰਮੇ ਨਾਲ ਇੰਨਾ ਪਾਣੀ ਹੋ ਚਾ ਲੈ ਸੁੱਕੇ ਰੂਪੀ ਦੇਗਾ ਉਹ ਨਾ ਫਾੜੀ ਦੀ ਲੋੜੀ ਪੱਲ ਪੱਲ ਕਰਦਾ ਤਾਂ ਬੜ ਚੁਰਬੀ ਦੇ ਜੱਮੇ ਹੁੰਦੇ ਮੈਂ ਪਰ ਪੂਰਾ ਪਾਣੀ ਹੋਵੇ ਚ ਕੱਚਾ ਪਾਣੀ ਆ ਵਿੱਚ ਉਹ ਰੰਗ ਦਾ ਨਹੀਂ ਕੱਚਾ ਤੱਤ ਕੱਚਾ ਉਹਦਾ ਹੱਥ ਤੱਤ ਕੱਚਾ ਜਿਸ ਨਾਲ ਜੰਮੜਿਆ ਉਹ ਜਿਹੜੀ ਇਹਦੇ ਵਿੱਚ ਪਾਣੀ ਬਸਿਰ ਜੰਮਣਾ ਪੱਕੇ ਮਟਰ ਨੂੰ ਫੇਰ ਪਾਣੀ ਦੀ ਲੋੜ ਆ ਰਾਹ ਤੋਂ ਕਹਿੰਦਾ ਜੰਮਣ ਬਾਅਦ ਤੇ ਤਰਤੀ ਕਹੀਦੀ ਮੈਂ ਕਿ ਬਿਲਕੁਲ ਗਲਤ ਜੰਮਣ ਬਾਅਦ ਪਾਣੀ ਚਾਹੀਦਾ ਨਨ੍ਹਾ ਨਾਸ ਤੇ ਧਰਤੀ ਜੀ ਤੇ ਧਰਤੀ ਨਹੀਂ ਗਈ ਬਣ ਕੇ ਫਰੀਦਾ ਦੇਖੀ ਧਰਤੀ ਦਾ ਦੇ ਅੰਦਰ ਇਹ ਬੀਜ ਹੈ ਬੀਜ ਧਰਤੀ ਹੋਈ ਹੈ ਬੀਜ ਪਾਣੀ ਹੈ ਔਰ ਪਰ ਵਾਸਤੇ ਬੜਵਾਲ ਵਾਸਤੇ ਅੱਜ ਫਿਰ ਹੋਰ ਖਰਾਕ ਦੇ ਤੋਂ ਦਿੱਤੀ ਧਰਤੀ ਆ ਡਾਕ ਵੜ ਕੇ ਫਸਦਾ ਹੋ ਜੂਗਾ ਜੰਮ ਦਾ ਪਿਆ ਹੈ ਠੀਕ ਹੈ ਕਾਹਾਂ ਕੁਝ ਖਾਊਗਾ ਹੂੰ ਫਿਰ ਬੱਚਾ ਅੰਡੇ ਚ ਪੈਦਾ ਹੋਏਗਾ ਹੋਏਗਾ ਬੱਚਾ ਪੈਦਾ ਹੋਏਗਾ ਲੋੜ ਦੀ ਲੋੜ ਹੈ ਵੋਨੌਂਡ ਪਾ ਕੇ ਰੱਖਿਆ ਲੋਕੂ ਵੀ ਬਚਾਈ ਗੱਲ ਕੀਤੀ ਜਿੱਨਾ ਜਦੋਂ ਪਾਣੀ ਜਿਹੜੀ ਆ ਜਾਂਦੇ ਤੁਰਕੇ ਉਹਦਾ ਚਰਵਾਹ ਜੀ ਖਰਾਬ ਉਹਦੇ ਵਿੱਚ ਪਈ ਹੈ ਕੂਲ ਦੇ ਬੱਚਿਆਂ ਦੀ ਬਹੁਤ ਕਿਰਦੀ ਖਰਾਬ ਉਹਦੇ ਵਿੱਚ ਪਈ ਹੈ ਅਸਤਰ ਕੋਈ ਖੜਾਉਦਾ ਉਹਨਾਂ ਨੂੰ ਨਹੀਂ ਹੈ ਉਹਦੇ ਵਿੱਚ ਪਈ ਹੈ ਜੇ ਇਹੀ ਦਾ ਕਰਾਮਾਤ ਇਹਦੇ ਵਿੱਚੋਂ ਤਾਂ ਅਸੀਂ ਗਿਆਨ ਲੈਣ ਕਾ ਰੁਣ ਕਹਿੰਦੀ ਉਹਨੂੰ ਪਤਾ ਸੀ ਉਹ ਕੂਝ ਦੇ ਜਾਣੇ ਇਹਨਾਂ ਚੌੜੇ ਪਹਿਲੇ ਹੀ ਸਰਾਬ ਉੱਥੇ ਰੱਖਦਾ ਇਹ ਤਾਂ ਬੱਚਾ ਦੀ ਵਿਚਾਰੀ ਉੱਥੋਂ ਪਤਾ ਲੱਗਦਾ ਉਹਨੂੰ ਫਿਕਰ ਸਬੂਤ ਹੈ ਫਿਕਰ ਦਾ ਸਬੂਤ ਹੈ ਜਿਹਨੇ ਪੈਦਾ ਕੀਤਾ ਰਸਵਾਲੀ ਕਰਦਾ ਧਿਆਨ ਰੱਖਣ ਦਾ ਸਬੂਤ ਹੈ ਉਪਰੋਂ ਉਹ ਚੱਲ ਜਾਊਗਾ ਤੇ ਨਜਰਾਉਣੇ ਅਰ ਜਿਹੜੇ ਬੋਸਮ ਦੇ ਵਿੱਚ ਪੁੰਚ ਜਾਂਦੀ ਹੈ ਬੱਚੇ ਨਿਕਲਦੇ ਜਾਂਦੇ ਉੱਥੇ ਜਦੇ ਉਹ ਉਹਨਾਂ ਦੇ ਰੋ ਜੇ ਉੱਥੇ ਉਹ ਬੋਸਮੂਦ ਵੇਗਾ ਬਲਸ ਕੇ ਕਹਿੰਦਾ ਆ ਬਾਅਦ ਦੇ ਦਿਨ ਲੈ ਨੂੰ ਘੜੂ ਉਹਨਾਂ ਦੇ ਕੋਲ ਜੀਵਨ ਆਣ ਮਾਤੇ ਉਲਵਾਉਂਦੇ ਨੇ ਅਟੂ ਤੂੰ ਜਦ ਜੀ ਪੀਂਦਦਾ ਪੋਆਦਨ ਕੋਈ ਸੁੱਧੀ ਨਹੀਂ ਜਿਵੇਂ ਮੈਨੂੰ ਤੋਂ ਪਹਿਲਾਂ ਦੁੱਧ ਬੰਦੇ ਦਾ ਬਿੰਦ ਨੇ ਲੈ ਗਏ ਨਾ ਬੰਦੇ ਦੇ ਪਿੰਡ ਦਾ ਲੈ ਕੱਟ ਘੱਟ ਬੱਦੇ ਰੁਪੀ ਸਵਾ ਕਈ ਬਵਾਰੀਆਂ ਵਾਸਤੇ ਆ ਥੋੜੀ ਥੋੜੀ ਬਣਾਉਂਦੇ ਤਾਂ ਤਾਂ ਕੱਝ ਬੋਝ ਹੱਡੀਆਂ ਨੇ ਨਾ ਜਾਂਦੀਆਂ ਪਹਿਲਾ ਹੱਟਿਆ ਨਾਲ ਬੋਲਦੀ ਹੈ ਨਹੀਂ ਕਿ ਧਾਰਨ ਗਰਦ ਬਣੀ ਪਚਾ ਕੇ ਗਿਆ ਨਹੀਂ ਖੂਨ ਨਾ ਨਾ ਪਹਿਲੀ ਧਾਰ ਨਹੀਂ ਪਹਿਲੀ ਧਾਰ ਕਿ ਜਦੋਂ ਉਹਨੇ ਨਾ ਮਾਰਿਆ ਜਹਿਰ ਨਾ ਨਾ ਉਹਦੇ ਦੇ ਪਿੰਡੇ ਜਿਹੜੇ ਜਗਨ ਦੇ ਵਿੱਚ ਜਨ ਜਨ ਪੜ ਪਹਿਲਾ ਬੱਚੇ ਉਹਨਾਂ ਦੀ ਕਰਦੇ ਹਾਂ ਕਰਦੇ ਨੇ ਉਹ ਪਹਿਲਾਂ ਇਕੱਲੇ ਹੁੰਦੇ ਰਹੇ ਇੱਕ ਇੱਕ ਦੋ ਦੋ ਧਾਰਾ ਮਾਰ ਦਿੱਤੇ ਨੇ ਤਾਂ ਅੱਗੇ 400 ਖਟਕੜ ਲੱਗੇ 400 ਖੀ ਨਿਕਲਿਆ ਉਹ ਨਾਲ ਗਈ ਕੱਟੂ ਗੱਲ ਚਾਹਦੇ ਸਾਰੇ ਦੁੱਧ ਅਸੀਂ ਪੀਤੇ ਦੇਖੇ ਠੀਕ ਹੈ ਚੁੱਪ ਦੇ ਦੇਖਣ ਕਹਤੇ ਨਾ ਉਹਨੂੰ ਖੇਲ ਤੇ ਖੇਲ ਤੇ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਲਤੇ ਸਾਧੂ ਮਿਲਤ ਸਤਗੁਰ ਬਚਨ ਸੁਣਾਏ ਨਰੇ ਕਿਉਂ ਖੇਲ ਤੇ ਆਇਓ ਅਨਕ ਜੋਨ ਸਾਰੇ ਦੁਖ ਜਿੱਤੇ ਹੁੰਦਾ ਤੇ ਵੀ ਹੁੰਦਾ ਦੁੱਖ ਕੋਈ ਖੇਦ ਹੁੰਦਾ ਖੇਦ ਉਤੇ ਗਲਤੀ ਦੁੱਖ ਤਾਂ ਨਾ ਗਲਤੀ ਹੁੰਦੀ ਆ ਲੇ ਵੀ ਆ ਨਾ ਕਰਦੇ ਜਿੱਦਾਂ ਅਸੀਂ ਆ ਗੋ ਕਰ ਲਿਆ ਉਹ ਕਿਉਂ ਕਰ ਲਿਆ ਖੇੜੇ ਆਪਣੀ ਮਰਜ਼ੀ ਨਾਲ ਚੱਲਦਾ ਓਕੜਾ ਹੁੰਦੀਆਂ ਨੇ ਓਕੜਾ ਦੇ ਆਪਣੀ ਕਿਉਂ ਕਿਉਂ ਨਹੀਂ ਖੇੜੇ ਸਾਧੂ ਖੇਤ ਕਿਉਂ ਬਠੇ ਆਪਣੀ ਮਰਜ਼ੀ ਛੱਡੀ ਮਰਜ਼ੀ ਦਾ ਖੇੜੇ ਖੇਰ ਪੈਦਾ ਹੁੰਦਾ ਮੇਰੇ ਤੇ ਇੰਨੇ ਸਾਧੂ ਮੇਲਤ ਸਾਧੂ ਮੇਲਤ ਸਾਧੂ ਮੇਲਤ ਉਹਦਾ ਦਾਸਾ ਵੀ ਕਹਿਦ ਕੇ ਪੈਦਾ ਹੁੰਦਾ ਤੇਰੇ ਤੂੰ ਹੋ ਗਿਆ ਭਾਣਾ ਦੀ ਕਿਉਂ ਹੋ ਗਿਆ ਖੇੜਾ ਦੁੱਖ ਹੈ ਆ ਕਿਉਂ ਨਹੀਂ ਹੋਇਆ ਦੁੱਖ ਹੈ ਮੈਂ ਤਾਂ ਸੀ ਰੱਬ ਨੇ ਕੀ ਕਰਿਆ ਨਹੀਂ ਕਰਿਆ ਕਦੇ ਆਲੂ ਨਹੀਂ ਕੀਤਾ ਦੇਖੇ ਮੈਂ ਆ ਤਾਂ ਬਲੱਡ ਨਹੀਂ ਕੀਤਾ ਬੰਦੇ ਦਾ ਤਾਲੂ ਟੁੱਟਾ ਇਹ ਤੋਂ ਕਰਾ ਲੈ ਜੀ ਉਹ ਰੇ ਕੀਤਾ ਹੋਇਆ ਹੈ ਜੇ ਹੈਪੀ ਹੈ ਅੱਜ ਹੀ ਮੰਨਿਆ ਰਹੀਏ ਕਰਦੇ ਇਹ ਮੰਨਿਆ ਕਰਦਾ ਜੇ ਮਨੀ ਉਹ ਮਾਰਦਾ ਫੇਰ ਤਾਂ ਹਾਂ ਫਿਰ ਉਹ ਡੀ ਨੀ ਦਿੰਦਾ ਹਾਂ ਡਰਾਈਵਰ ਨਹੀਂ ਦਿੰਦਾ ਵਿੱਚ ਬੈਠਾ ਟਾਇਰ ਤੇ ਗੁੱਸਾ ਕਰਦੇ ਚਲਾ ਟਾਇਰ ਚੜਿਆ ਟਾਇਰ ਤਾਂ ਚੜਿਆ ਤਾਂ ਚੜ ਗਿਆ ਅਦਾਲਤਾ ਤਾਂ ਟਾਇਰਾਂ ਨਾਲ ਚਲਾਣ ਕਰਦੀਆਂ ਵੜੀ ਤੇ ਕਿਹਦੇ ਗੱਡੀ ਦਾ ਡਰਾਈਵਰ ਵੀ ਹੋਵੇ ਇੱਥੇ ਤਾਂ ਇੱਕ ਤੇ ਕੰਮ ਕਰਾਉਣ ਵਾਲਾ ਵੀ ਹੋਰ ਬੈਠਾ ਇੱਕ ਹੋਰ ਪਿੱਛੇ ਉਹ ਦੋ ਅਰੇ ਕਿ ਪਟਪਾਣਾ ਮਠਾਣਾ ਲਾ ਕਰਨਾ ਗਾੜੀ ਵੀ ਸਾਹਮਣੇ ਸੁਝਾ ਦੀਂਦਾ ਕਰਦਾ ਮੈਂ ਕੀਤਾ ਸੀ ਕਿ ਗਲਤੀ ਹੋ ਗਈ ਮੈਨੂੰ ਪਤਾ ਗਲਤੀ ਹੋਈ ਹੈ ਜਿਹੜੀ ਗੱਲ ਦਾ ਮੈਨੂੰ ਪਤਾ ਗਲਤੀ ਹੋਈ ਹੈ ਗਲਤ ਹੈ ਤੂੰ ਮੇਤੋ ਗਲਤੀ ਹੋਈ ਹੈ ਜੋ ਮੈਨੂੰ ਜੋ ਮੈਨੂੰ ਪਤਾ ਹੀ ਗਲਤ ਹੈ ਜੋ ਮੈਂ ਜਾਣੇ ਉਹੀ ਗਲਤ ਹੈ ਸੋਈ ਅਜਾਣ ਕਹੇ ਮੈਂ ਜਾਣਦਾ ਜਿਹੜਾ ਕਹਿੰਦਾ ਮੈਂ ਜਾਣਦਾ ਉਹੀ ਤਾਂ ਜਾਣਦਾ ਉਹੀ ਤਾਂ ਗਲਤ ਹੈ ਇਹ ਤਾਂ ਜਾਣਦਾ ਹੀ ਕੁਛ ਨਹੀਂ ਕਹਿੰਦਾ ਮੈਂ ਤੋ ਗਲਤੀ ਹੋਈ ਹੈ ਗਲਤੀ ਇਹ ਤੋਰੀ ਕਹਿੰਦਾ ਮੈਂ ਬਾਪ ਕੀਤਾ ਫੋਨ ਦੇ ਕੀਤਾ ਇਹ ਕਹਿੰਦਾ ਮੈਂ ਬਾਪ ਕੀਤਾ ਬਾਪੇ ਨੇ ਕੀਤਾ ਇਹਦਾ ਵੀ ਇਹੀ ਜਾਣਦਾ ਇਹ ਮੇਰਾ ਦੋਸਤ ਨੂੰ ਸੰਸਾਰ ਕੀ ਦਾ ਸੰਸਾਰ ਤੋਂ ਨਹੀਂ ਕੀਤਾ ਠੀਕ ਇਤਹੀ ਜਾਣਦਾ ਨਾ ਜਿਹੜਾ ਇੱਥੇ ਤੱਕ ਜਾਣਦਾ ਉਹ ਹੋਰ ਜਾਣਦਾ ਕੁਛ ਵੀ ਨਹੀਂ ਜਾਣਦਾ ਸੱਚੀ ਚਾਲਣ ਹਾਰ ਤੂੰ ਰਹੀ ਰਾਜਾ ਰਾਮ ਦੀ ਘਾੜੀ ਨੂੰ ਚਾਲਣ ਜਿਹੜਾ ਹੈਗਾ ਉਹ ਪ੍ਰਭੂ ਪ੍ਰਵੀਰ ਜਾਨ ਰਿਹਾਰ ਪ੍ਰਭੂ ਪਰਬੀਰ ਜਾਨ ਰੇ ਬੋਤਾ ਤੈਨੂੰ ਖੋਜਣਾ ਬਹੁ ਆ ਜਾਨ ਰਿਹਾਰ ਬਾਹਰ ਭੇਖ ਉਹਦਾ ਤਾਂ ਦੇਹ ਹੁੰਦੀ ਓ ਨਹੀਂ ਬਾਹਰ ਭੇਹ ਹੁੰਦਾ ਹੀ ਨਹੀਂ ਠਾਕਾਂ ਇੱਥੇ ਨਾ ਖੜੋ ਉਹ ਮੇਰੇ ਵੈਰੋਂ ਬੈਠ ਨਹੀਂ ਜੋ ਸਾਨੂੰ ਦਿਖ ਰਿਹਾ ਹੈ ਇਹ ਗਲਤ ਹੈ ਇਤਿਹਾਸ ਸਾਰਾ ਇੱਥੋਂ ਰੱਦ ਹੋ ਗਿਆ ਜੀ ਦੇ ਵਜਾ ਸਰਦਾਰ ਹੋ ਗਿਆ ਰੱਦ ਤਾਂ ਕਰੇ ਇਹਨੂੰ ਤੇ ਇਹ ਰਹਿ ਗਿਆ ਅਜੇ ਉਹ ਤਾਂ ਕਹਿ ਰਿਹਾ ਤੇਰਾ ਕੀ ਆ ਮਿੱਠਾ ਲਾ ਕੇ ਤਸਪਾਸ਼ਾਇ ਕਾਇਕੇ ਵੀ ਫੈਜੀਤ 베ਰੀ ਨਾਲ ਕਿਰਪਾ ਕਰ ਗੇ ਕਰ ਦੇ ਦਿਗਾ ਇਹ ਕੌਣ ਲਿਖ ਦੂਗਾ ਕਿਤੇ ਮੈਨੂੰ ਹਿਸਟਰੀ ਦੇ ਵਿੱਚ ਬਹਾ ਭਾਰਤ ਵਿੱਚ ਕਿਤੇ ਰਮਾਨ ਤੇ ਜਿੱਤ ਤਾਂ ਉਹਦੀ ਕਿਰਪਾ ਨਾਲ ਕਿਤੇ ਨਾ ਸੋਹ ਜ ਰਮਾਨ ਕਿਤੇ ਕਿਸੇ ਵਿਦਵਾਨ ਦੀ ਗੱਲ ਹੀ ਲਿਖੀ ਇਹ ਫਿਰ ਦਸ ਪਾਸ਼ਾ ਦੀ ਲਿਖੀ ਹੋਈ ਹੈ ਦੁਆ ਤੇ ਗੱਲ ਲਿਖ ਰਿਹਾ ਦੁਆ ਤੇ ਹੀ ਆ ਰਿਹਾ ਇਹ ਗੱਲ ਆਪਣੇ ਆਪ ਵਿੱਚ ਸਬੂਤ ਹੈ ਕੋਈ ਜਿੱਤ ਮੇਰੀ ਕਿਰਪਾ ਨਾਲ ਤੇਰੀ ਜਿਹੜੀ ਆਪਾਂ ਗੱਲ ਕਰਦੇ ਵੀ ਉਹਨਾਂ ਦੀ ਉਪੰਤੀ ਹੈ ਉੱਥੇ ਐਸਾ ਕੁਝ ਲਿਖਿਆ ਹੋਇਆ ਵਿਚਾਰਧਾਰਾ ਨੂੰ ਜਨੂਅਰ ਵਾਲੇ ਦਾ ਦੁਆ ਬਿਦਮਾ ਤਾਂ ਸਕਦਾ ਉਹ ਗੱਲ ਕਈਆਂ ਥੋੜੇ ਜਿਹੇ ਦੀ ਪੰਕਤੀ ਹੋਈ ਆ ਹਾਂ ਹਾਂ ਉਹ ਬੂਹ ਥੋੜੇ ਜੇ ਫਰਕ ਪਾ ਕੇ ਥੋੜੇ ਜੇ ਫਰਕ ਜਾਨੀ ਜਾਨ ਸੋ ਤੋਂ ਵੱਡਾ ਹੋਤਾ ਦੋ ਤਿੰਨ ਦੋਰੇ ਦੇ ਉੱਤੇ ਕੁਝ ਨਾ ਕੁਝ ਐਸਾ ਪਿਆ ਜਿੱਦੋ ਹਿਸਾਬ ਦੁੱਧ ਨਾਲ ਇੱਕ ਜਿਹੜਾ ਉੱਥੇ ਜਿਹੜਾ ਹੈ ਰਾਜੇ ਨਾਲ ਜਿਹੜੀ ਜੋਗੀ ਜਿਹੜਾ ਰਾਜਾ ਜੋਗੀ ਬਣਨ ਜਾਂਦਾ ਹੈ ਉਹਦੀ ਘਰ ਵਾਲੀ ਰੋਕਦੀ ਆ ਉਹ ਤਿੰਨ ਮੱਤਾਂ ਇਕੱਠੀਆਂ ਕਰੀਂ ਗਿੱਟੀਆਂ ਉੱਥੇ ਤਿੰਨ ਮੱਤਾਂ ਇਕੱਠੀਆਂ ਲੈਂਦੀ ਆ ਕਿ ਗੁਰਮੱਤਾਂ ਵੀ ਨੇ ਬ੍ਰਹਮ ਕਹਿਣ ਉਹ ਜੋਗੀ ਵੀ ਕਰਾ ਕੇ ਗਿਆ ਉਹ ਬ੍ਰਹਮ ਕਹਿਣ ਚ ਕੀ ਕੱਚਾ ਹੈ ਉੱਥੇ ਕਈ ਕੁਛ ਅਲਿਆਰ ਸਮਝ ਨਾ ਤੈਨੂੰ ਮਤਾਂ ਦਿਖਾਈਆਂ ਨੇ ਉੱਥੇ ਨਹੀਂ ਨਹੀਂ ਇਕੱਠੀ ਹੋ ਰਹੀ ਉਹ ਉਹ ਤੇ ਜਵਾਬ ਦੇ ਰਹੀ ਹੈ ਵੀ ਤੂੰ ਮੰਨ ਕੇ ਵੀ ਜੇ ਛੱਡ ਕੇ ਜਾਏਗਾ ਉਹ ਚੱਲਦੀ ਹੈ ਹਾਂ ਭਾਗ ਕੇ ਆ ਹਮਰਤਾ ਜਨਾਨੀ ਰਾਣੀ ਬੋਲਦੀ ਹੈ ਰਾਣੀ ਬਾਜ ਕਹਿ ਰਹੀ ਹੈ ਵੀ ਉੱਥੇ ਵੀ ਜਿਹੜੇ ઋષਿ ਵੀ ਹੋਏ ਤੁਸੀਂ ਕਹਿੰਦੇ ਹੋ ਕਿ ਬ੍ਰਹਮ ਗਿਆਨ ਦੇ ਰਣ ਹੋਇਆ ਵੀ ઋષਿ ਵੀ ਤਾਂ ਇੱਥੇ ਹੀ ਬੈਠਾ ਹੋਏ ਨੇ ਇੱਥੇ ਹੀ ਬੈਠਾ ਉਹ ਸਾਰੀ ਗੇੜ ਦੀ ਗੱਲ ਕਰ ਰਹੀ ਇਹ ਬੜੀ ਕਿ ਸੰਕਲਪ ਪੜਦੇ ਅਸਲ ਪੜਦੇ ਹੀ ਇੰਜਰ ਹੈ ਬੜਾ ਧੁੰਮਿਆਂ ਚ ਵੀ ਡੋਲਣਾ ਹਾਂ ਡੋਲਦਾ ਹੈ ਬੜਾ ਹੀ ਹੁਣਾ ਬਣਾਉਣਾ ਪੜਦਾ ਨਾ ਬ੍ਰਹਮ ਗਿਆਨੀ ਬ੍ਰਹਮ ਗਿਆਨ ਕਰਾ ਕੇ ਗਿਆ ਜੋਗੀ ਜਿਹਨੂੰ ਕਹਿੰਦੇ ਉਹ ਐਂ ਗਹਿ ਗਿਆ ਜਾਂ ਦੇਖ ਉਹ ਉਹ ਇਹਦੇ ਉਹਦੇ ਬ੍ਰਹਮ ਗਿਆਨ ਚ ਕੱਚਾ ਜੋਗੀ ਕੇ ਉਹਨੇ ਦੀ ਗੱਲ ਬਾਕੀ ਕਹਿੰਦਾ ਸਹੀਆਂ ਕਹਿ ਸਹੀ ਕਰਦਾ ਸਾਰੀਆਂ ਬੇਰਾਗੀ ਬੰਦਨ ਕਰੇ ਕਾਗੋ ਬੜੋ ਆ ਉਹ ਦਿਖਾਤਾ ਨਾਲੇ ਇਹਦੀ ਦੇ ਪੂਰੇ ਨਕਸ਼ੇ ਦਿਖਾਏ ਨਾਲੇ ਇਹਦੀ ਕਾਸ਼ਮਾਨੀ ਕੱਟਦੀ ਬਾਤ ਹੋਣੀ ਕਿਉਂਕਿ ਉਹ ਕਾਸ਼ਮਾਨੀ ਬਾਹਰ ਹੁੰਦੀ ਹੋਣੀ ਕੋਈ ਇੱਕਣ ਕਹਿੰਦੇ ਨੇ ਜਿਹੜੇ ਬਾਹਰਲੀ ਇਹਨਾਂ ਤੇ ਵਿਸ਼ਵਾਸ ਉਹਨਾਂ ਦੀ ਆਕਾਸ਼ਮਾਨੀ ਬਾਹਰ ਤਾਂ ਬੂਕਾ ਕਹਿ ਬੋ ਇਹ ਤੇ ਕਵੀ ਨੇ ਰੱਦ ਕਰਦੇ ਆਕਾਸ਼ ਮੰਡਲ ਨੂੰ ਕਾਸ਼ੀ ਤੇ ਤੋਂ ਰੁਕ ਜੇ ਕਹਿਤਾ ਆੜਾ ਕੱਟਦਾ ਆਕਾਸ਼ ਕਾਸ਼ੀ ਤੇ ਤੋਂ ਰੁਕ ਜੇ ਤੂੰ ਕਾਸ਼ੀ ਜਾਂਦਾ ਕਾਸ਼ੀ ਰੱਖਿਆ ਸੀ ਉਹਦਾ ਆਕਾਸ਼ੀ ਨਹੀਂ ਰੱਖਿਆ ਹੋਇਆ ਕਿਵੇਂ ਅਸੀਂ ਵੱਡਾ ਸਾਰਾ ਉਹਨਾਂ ਨੇ ਕਾਸ਼ੀ ਰੱਖਿਆ ਸੀ ਕਾਸ਼ੀ ਤੇ ਤੋਂ ਰੁਪਿਆ ਤੋਂ ਕਾਸ਼ੀ ਆਏ ਜਾਏ ਕਾਸ਼ੀ ਫੁੱਟੇ ਮੰਡਾ ਤੋਂ ਕਹੋ ਸਮਾਏ ਜਿੱਤੋਂ ਅੰਦਰ ਸਾਡੇ ਕਲਪਨਾ ਪੈਦਾ ਹੁੰਦੀ ਹੈ ਉਹ ਕਾਸ਼ੀ ਹੈ ਜੀ ਕਾਜ ਹੈ ਕਾਸ਼ੀ ਹੈ ਦੋਨੋਂ ਦਾ ਕਾਸ਼ੀ ਕਲਪਨਾ ਵੀ ਉੱਥੋਂ ਪੈਦਾ ਹੁੰਦੀ ਹੈ ਨਾਮ पे ਉੱਥੋਂ ਪੈਦਾ ਹੁੰਦਾ ਕਾਸ਼ੀ ਨਾਮ ਜਦ ਪੈਦਾ ਹੁੰਦਾ ਹੈ ਕਲਪਨਾ ਨਹੀਂ ਪੈਦਾ ਹੁੰਦੀ ਆ ਗਈ ਹੈ ਕਾਰਬੂਦ ਦੀ ਹਸਤੀ ਬਲ ਬੋਰਾ ਰੇ ਇਹ ਹਾਂ ਉਹ ਗਏ ਉਹ ਨਾਮ ਜਹਾਲ ਹਾਂ ਉਸ ਗੱਲ ਨੂੰ ਕਿਸ ਢੰਗ ਨਾਲ ਕਿਹਾ ਹੈ ਸਮਝਾਉਣ ਵਾਸਤੇ ਲਫ਼ਜ਼ ਕਿਸ ਤੇ ਬਾਤ ਕੀਤੇ ਤਾਂ ਅਲੱਗ ਅਲੱਗ ਭਾਵਨਾ ਕੀ ਹੈ ਸਵਾਲ ਹੈ ਸਮਝਾਇਆ ਹੋਇਆ ਕੀ ਹੈ ਉਹ ਜਿਹੜਾ ਗੱਲ ਕਿਹੜੀ ਹੈ ਸਵਾਲ ਹੈ ਦੱਸ ਥੋੜੇ タルਮ タルਮ ਬਹੁਤ ਖੜੇ ਹੁੰਦੇ ਕਿ ਬਾੜੂੜੀ ਕੀ ਆ ਲੈ ਉਥੋਂ ਨੁਖੇਣਾ ਕਰਨਾ ਉਹ ਘੋੜਾ ਜਿਹੜੀ ਗੁਰੂ ਤੇ ਗੁਰੂ ਜਿਹੜੀ ਆਪਣੀ ਮੱਤਾਂ ਨੂੰ ਮਬੂਜੋ ਉਥੇ ਕੀ ਜਿਵੇਂ ਉਹ ਗਰਾਵ ਸਿੰਘ ਵਾਲੇ ਪ੍ਰਭੂ ਚੰਦਰ ਨਾਟਕ ਜਿਵੇਂ ਆਪਾਂ ਗੱਲ ਕਰਕੇ ਜਿਵੇਂ ਉਹਦੇ ਤਾਂ ਹਾਇਓ ਨਹੀਂ ਹਾਇਓ ਨਹੀਂ ਗੱਲ ਜਿਵੇਂ ਨੇ ਜਿਸ ਤਰੀਕੇ ਨਾਲ ਉਹਨੇ ਨਵਤ ਪੈਦਾ ਕੀਤੀ ਏ ਸ੍ਰੀ ਗੁਰੂ ਜੀ ਯਾਨੀ ਕਿ ਇੱਥੇ ਦੇ ਇੱਥੇ ਜਿਹੜੀਆਂ ਮਨਕੀਆਂ ਮੱਤਾਂ ਨੇ ਉਹਦੀਆਂ ਕਮਜ਼ੋਰੀਆਂ ਕੁਰਿਤੀਆਂ ਉਹਦੀਆਂ ਹੈਰਾ ਫੇਰੀਆਂ ਉਹਦੇ ਓਗਣ ਦਸਾਇ ਦਿੱਸੋ ਗੁਰਮਤਾਇਂ ਦਲੀ ਦਿੱਤਾ ਗੁਰੂ ਨਾਨਕ ਚਾਰ ਕਰਨਾ ਹੋਵੇ ਆਪਣਾ ਇੰਤਲ ਨਹੀਂ ਦਈਦਾ ਆਪਣਾ ਇੰਤਲ ਫੇਰ ਦਿੰਦਾ ਤਾਂ ਆਪਣਾ ਇਗਲੇ ਜੇ ਵਦਾਈ ਤਾਂ ਕਾਇਮਾ ਲੱਭਦਾ ਉਹ ਕਹਤਾ ਉਹ ਤਾਂ ਭੱਜ ਕੇ ਰਹਿੰਦਾ ਸੱਚ ਦੱਤਾ ਹੋਇਆ ਵੀ ਇਹਨਾਂ ਕੋਲ ਸੱਚ ਆਹੀ ਹੈ ਹੋਰ ਇਹੋ ਕੁਝ ਨਹੀਂ ਜਦ ਕਿਸੇ ਤੋਂ ਦੂਰ ਰਹਿਣ ਦੀ ਗੱਲ ਚੀਜ਼ ਤੇ ਆਪਾਂ ਉਹਨੂੰ ਦੱਸੇ ਜੇ ਸ਼ਰਾਬ ਦੀ ਦਿਲ ਰੋਗ ਸ਼ਰਾਬ ਕਰੇ ਜਾਂ ਸ਼ਰਾਬ ਦੇ ਕੋਲ ਗੱਲ ਕਰਾਂਗੇ ਉੱਥੇ ਕੀ ਹੁੰਦਾ ਜੋ ਤੇ ਉੱਤ ਹੈ ਜੋ ਤੇ ਦੀ ਘਟਣਾ ਪਾਪਰ ਦੀ ਸਾਰੀ ਜਿਵੇਂ ਰਵਾਨ ਤੇ ਆ ਕੇ ਬਚਨ ਦੀ ਤਾਂ ਗੱਲ ਕਿਥੇ ਦੀ ਹੈ ਬਾਈ ਬੱਚਾ ਉਹ ਕਿਹੜੀ ਗੀਤ ਦੀ ਬਦਨਾਮੀ ਸਮਝਦੇ ਨੇ ਉਹਨੂੰ ਐਸੇ ਬੰਦੇ ਨੇ ਕਕਈ ਨੂੰ ਬਾੜਾ ਸਮਝਦੇ ਨੇ ਪਰਤ ਨੂੰ ਜੰਦਾ ਸਮਝਦੇ ਨੇ ਅਲੱਗੇ ਪਰਤ ਕਾਰਨਾਂ ਜੀ ਦੇ ਕਾਰਨ ਕਕਈ ਜਿਹੜਾ ਜਲੇਆ ਕਕਈ ਜਿਹੜਾ ਆ ਕੇ ਕਰਨ ਦੀ ਜਿਹੜੇ ਰਨ ਹਾਲੇ ਬੱਤ ਪੜਨ ਰਨ ਵਰਤ ਨੂੰ ਚੇਕਾ ਮਨੇ ਪੱਤੂ ਜੂ ਗਿਆ ਬਨੇ ਜਾਂਦਾ ਹੋਰ ਮੈਂ ਰਾਜ ਰਣ ਹੋਰ ਬਰੀ ਕਰਤਾ ਜਾਉ ਚਲਦੇ ਨਹੀਂ ਬਰੀ ਆ ਤੇ ਬਾਹਰ ਦੇ ਬੱਚੇ ਖਤਰ ਕਰਦਾ ਆ ਬੱਚਾ ਥੋੜਾ ਜਿਹਾ ਜਗਾ ਲੈ ਵੀ ਤੂੰ ਥੋੜੀ ਬਾਜੀ ਨਾਲ ਸੇ ਅਬਲ ਸਕਦੀ ਆ ਵੀ ਕਾਰਨ ਬੁਰੀ ਕਰਦਾ ਬੋਲੋ ਡਿਸਕਸ ਕਰਕੇ ਸੁਭਾਜੇ ਕਿ ਡਿਸਕਸ ਨਹੀਂ ਸੁਭਾਜ ਦੇ ਸਾਰੇ ਪੱਖ ਇਕ ਡਿਸਕਸ ਕੀਤੇ ਰਹੇ تھے ਪਰ ਬਹਿਲਦੇ ਸੁਮਾਜਿਕ ਗੱਲ ਹੈ ਹਿਸਟਰੀ ਸੁਭਾਜਿਕ ਗੱਲ ਹੈ ਧਰਮ ਨੂੰ ਨਾਲ ਖੜਾ ਕਰਕੇ ਸਮਾਜ ਦੇ ਸਿਸਟਮ ਕੀਤਾ ਨਹੀਂ ਜਦੋਂ ਉਹਨਾਂ ਨੂੰ ਮਨਾਉਂਦਾ ਵੀ ਜਿਹੜੇ ਉਹਨਾਂ ਦਾ ਦਿਖਾਇਆ ਵੀ ਮਾਰਕੀ ਛੱਡ ਕੇ ਚਲੇ ਜਾਊਗਾ ਜਿਹੜਾ ਛੱਡ ਕੇ ਜਾਂਦਾ ਜਿਹਨੂੰ ਪੁੱਛੂ ਕਿਉਂ ਛੱਡ ਕੇ ਜਾਂਦਾ ਕੀ ਜਵਾਬ ਦੇਊਗਾ ਗਲਤੀ ਕਰਕੇ ਛੱਡ ਕੇ ਜਾਂਦਾ ਵਾਵ ਦੇ ਹੀ ਦਊਗਾ ਯਾ ਮੈਂ ਵਾਵ ਦਊਗਾ ਤੇ ਲੀਲੇਦਊਗਾ ਤੇ ਲੀਲੇ ਵੀ ਉਹ ਦਊਏ ਸੌਲਟ ਹੈ ਖੋਸਾ ਉਹ ਤੇ ਜਿਹੜੀ ਭਾਈ ਉਹ ਰਾਈਟਰ ਰਾਜਾ ਗਲਤ ਹੈ ਕੀ ਐਂਗਲ ਜਦੋਂ ਉਹ ਜੋਗੀ ਕਹਿ ਗਿਆ ਸੰਸਾਰ ਗਲਤ ਕਹਿ ਰਿਹਾ ਜੋਗੀ ਜੋਗੀ ਗਲਤ ਕਹਿ ਰਿਹਾ ਛੇਪ ਘਰ ਹੈ ਜਿੰਨੂੰ ਭੰਗ ਦਾ ਮੈਨੂੰ ਸਮਝ ਨਿਕਲ ਗਿਆ ਨਾ ਵੀ ਇਹ ਇਧਿਆਪੋਤ ਕਿਉਂ ਹੁੰਦਾ ਨਹੀਂ ਵੀ ਕੇ ਜਜਾਲ ਹੈ ਮੈਂ ਬਰਥਾ ਹਾਂ ਇਹ ਕਹਿੰਗੇ ਉਹ ਉਚਾੜ ਕਰ ਦਿੰਦਾ ਰਾਜਾ ਨਹੀਂ ਨਹੀਂ ਰਾਜਾ ਇਹੀ ਗਲਤੀ ਹੈ ਮਤਲਬ ਉਹ ਤਾਂ ਦੇ ਲੈਵਲ ਤੋਂ ਤਾਂ ਦੇ ਲੈਵਲ ਤੋਂ ਜਾਦੇ ਬਾਹਰ ਇਹ ਆ ਗੱਲ ਪਈ ਪਰ ਮੈਂ ਫਰਕ ਕੀ ਹੈ ਪਰ ਮੈਂ ਤਾਂ ਹੀ ਦੱਸਦਾ ਨਾ ਕਿ ਬੁਰਾਈ ਤੋਂ ਦੂਰ ਭੱਜਣਾ ਬੁਰਾਈ ਦਾ ਸਾਰੇ ਮਨ ਚੋਂ ਬੁਰਾ ਬਿਠਾਉਣਾ ਤੁਸੀਂ ਬੁਰਾਈ ਤੋਂ ਨਹੀਂ ਬਚ ਸਕਦੇ ਬੁਰਾਈ ਤੁਹਾਡੇ ਨਾਲ ਨਾਲ ਹੈ ارے کوئی بھائیوں ختم نہیں کر سکتا بھائی تو ذی کے بوزن کر دو جڑے کہیں نہ ظلم دے خلاف لڑتے رہے 10 ਬੜੇ ਗਲਤੀ ਕਰ ਸਕਦੇ ਆ ਉਹਨਾਂ ਦਾ ਦ੍ਰਿਸ਼ਟੀਕੋਣ ਆਪਣੇ ਬਰਬਖੜੇ ਪਹਾੜਾਂ ਦਾ ਫਿਰ ਕੁਝ ਬਣਾ ਹੋਇਆ ਕੀ ਛਾਦ ਨਾ ਕੋਈ ਬੈਰੀ ਨਾ ਹੈ ਬਿਗਦੋ ਉਹ ਤਾਂ ਬੈਰੀ ਵਾ ਨਾ ਉਹ ਡਿਵਟੇ ਨਾ ਸਭੀ ਬੰਨਾਂ ਨੂੰ ਨਹੀਂ ਬਿਠਾ ਨਹੀਂ ਫੇਰ ਗੁਰਮਤਿ ਕਿਥੇ ਨਹੀਂ ਸਾਰਾ ਪ੍ਰਚਾਰ ਜੇ ਤੁਸੀਂ ਤਾਂ ਪੜੋਗੇ ਸਾਰਾ ਹੀ ਗੁਰਮਤਿ ਕਿਸਲਾ ਕਰੂਗੀ ਨਹੀਂ ਚੜ੍ਹ ਜਾਈਂ ਬਿਠਦੇ ਕਰਤੇ ਨਾ ਜਦੋਂ ਆ ਕੇ ਇਹਨਾਂ ਨੇ ਰਮਾਂਡ ਦੇ ਉੱਤੇ ਸਟੈਂਡ ਕਰ ਲਿਆ ਗੁਰਮਤਿ ਦੂਰ ਹੋ ਗਏ ਇਹ ਤਾਂ ਹੋ ਗਿਆ ਚਾਹ ਵਿਦਿਆਸਥੀ ਤੇ ਉਹਨਾਂ ਨੇ ਵਿਦਿਆਸਥੀ ਨੂੰ ਹੱਥ ਬੋਲਿਆ ਥੋੜੇ ਹੋ ਤੇ ਸੱਚਾ ਉਹਨੂੰ ਝੂਠਾ ਬੁਲਾ ਲੈ ਇੱਦਾਂ ਹੀ ਫਰਕ ਪੈਂਦਾ ਮਨਤਾ ਜਿਹੜੂ ਨੂੰ ਸੱਚ ਲੈ ਆ ਉੱਥੇ ਤੁਸੀਂ ਖੜ ਗਏ ਤੇ ਉੱਥੇ ਕੀ ਕਾਹਗੇ ਝੂਠ ਦੇ ਖਿਲਾਫ ਲੜੇਗੇ ਕਿਹਦੇ ਝੂਠ ਦੇ ਖਿਲਾਫ ਕਾਹਾਂਗੇ ਦੇਖ ਤਾਂ ਝੂਠ ਦੇ ਖਿਲਾਫ ਲੜੇਗੇ ਕੀ ਕਾਹਾਂਗੇ ਉੱਥੇ ਉਹ ਸੱਚ ਦੇ ਡਿਫੈਂਸਿਵ ਵਾਸਤੇ ਲੜੇਗੇ ਹਮਲਾ ਨਹੀਂ ਕੀਤਾ ਸੱਚ ਦੇ ਡਿਫੈਂਸ ਵਾਸਤੇ ਆਪਣੇ ਡਿਫੈਂਸਿਵ ਹੋਏ ਨੇ ਉਹ ਆਫੈਂਸਿਵ ਨਹੀਂ ਜਪਨ ਸਕੀਟਾ ਡਬਲਸ ਅਪਰਲ ਬੁਰਦੇ ਵਗਦ ਨਹੀਂ ਵੀ ਹਾਥੀਪੁਰੇ ਸੜਤਾ ਠੀਕ ਹੈ ਪਰਮੇਸ਼ਰ ਦੇ ਖਲ ਕਹਿੰਦੇ ਕੋ ਬੂਧੂ ਬਾਪੜਾ ਨਾ ਬਾਪੜਾ ਨਹੀਂ ਹੈਗਾ ਵੀ ਬੁਰਦਾ ਵਗਦ ਬਣ ਜਾ ਜੇ ਤੂੰ ਕਹਾਂ ਮੈਂ ਜ਼ਰਾ ਉਹ ਬੰਦ ਕਰ ਦੂੰਗਾ ਸੱਚ ਬੋਲਣ ਦਾ ਤੇ ਤੂੰ ਵੀ ਆਜ ਬੇਬੇ ਵੀ ਆਜ ਮੈਨੂੰ ਫਤੋ ਦੋ ਅੱਤ ਕੱਲੇ ਨੇ ਜੇ ਪਰਮੇਸ਼ਰ ਨੇ ਉਹ ਬੰਦ ਕਰਨਾ ਚਾਹਦਾ ਹੈ ਪਤਾ ਤਾਂ ਤਾਲੂਗ ਹੋਗਾ ਬਾਕੀ ਫੈਸਲਾ ਪਰਮੇਸ਼ਰ ਦਾ ਹੁੰਦਾ ਹੈ ਰਜ਼ਾ ਕੀ ਹੈ ਦੇਖਣ ਵਾਸਤੇ ਜੰਗ ਕਰਨੀ ਪਊ ਕਰਦੀ ਨਾ ਕੋਈ ਜੇ ਮੈਂ ਜੋਬ ਹੋ ਗਿਆ ਤਾਂ ਮੈਂ ਆਪਣੀ ਮਰਜ਼ੀ ਨਾਲ ਚੋ ਗਿਆ ਕਰਦਾ ਇਹ ਕਰਦਾ ਕਰਦਾ ਮੈਂ ਫੈਸਲਾ ਤੇ ਹੈ ਪਰ ਮੇਸ਼ਰਾਂ ਦਾ ਫੈਸਲਾ ਮੈਂ ਆਪਣੀ ਮਰਜ਼ੀ ਫੌਜ ਹੈਗੀ ਆ ਜੰਗ ਨਹੀਂ ਕਰਨਾ ਕਮਿਟਮੈਂਟ ਹੋ ਗਈ ਸੀ ਵੀ ਤੁਸੀਂ ਜੰਗ ਨਹੀਂ ਕਰਨਾ ਜਾਂ ਤੁਹਾਡੇ ਤੇ ਹਮਲਾ ਵੀ ਹੋ ਜਵੇ ਛੇਵੇਂ ਬਾਸ਼ਾ ਚ ਵੀਰੇ ਥੋੜਾ ਜਿਹਾ ਹਮਲਾ ਹੋਵੇ ਤੁਸੀਂ ਜੰਗ ਨਹੀਂ ਕਰਨਾ ਤੇ ਬੀ ਚੀਜ਼ਾਂ ਨੇ ਧਰਮ ਨੀਤੀ ਇੱਥੇ ਉਹ ਡਿਸਕਸ ਕੀਤੀ ਜੀ ਰਾਜ ਨੀਤੀ ਧਰਮ ਨੀਤੀ ਯੁੱਧ ਨੀਤੀ ਤੇਤੀਤੀ ਜੀ ਨੀਤੀਆਂ ਪੂਰੀ ਉਸ ਗੁਰੂ ਕਰ ਕਿ ਕ੍ਰਿਤੀ ਵਰਤੀ ਹੈ ਪਹਿਲਾਂ ਅੱਜਾ ਗੁਰੂ ਦਾ ਧਰਮ ਦੀ ਯੋਧੇ ਨੀਤੀਆਂ ਰਾਜਨੀਤੀ ਦੀਵਰਤਕ ਫਕਤਾਂ ਨੀਤੀਵਰਤਕ ਇਹਨਾਂ ਦੇ ਵਿੱਚ ਨਾ ਵਰਤਿਆ ਰਾਜਨੀਤਿਕ ਉੱਥੇ ਪੜ੍ਹ ਲੈ ਜੋ ਇਹ ਧਰਮ ਨੀਤੀ ਸੀ ਤਾਂ ਕੱਲ੍ਹ ਤੱਕ ਫਿਰ ਦੀ ਬੱਲੇ ਭਾਸ਼ਾ ਬਾਰੇ ਧਰਮ ਨੀਤੀ ਸੀ ਧਰਮ ਸਰੀਰ ਦੇਣਾ ਧਰਮ ਨੀਤੀ ਸੀ ਰਾਜਨੀਤਿਕ ਯੋਧੇ ਨੀਤੀ ਦੀਵਰਤਕ ਕਿਵੇਂ ਬਾਸ਼ਾ ਤੋਂ ਬਾਅਦ ਤੱਕ ਪੱਜ ਗੁਰੂ ਨਾਲ ਅੱਧ ਤੱਕ ਅੱਧ ਤੋਂ ਬਾਅਦ ਧਰਮ ਪਰਿਤੀ ਦੇ ਤਹਿਤ ਧਰਮ ਪਰਿਤੀ ਦੇ ਤਹਿਤ ਯੁੱਧ ਨੀਤੀਆਂ ਰਾਜਨੀਤੀ ਤੋਏ ਵਰਤੀਆਂ ਜੇ ਤੁਹਾਨੂੰ ਹੋ ਗਿਆ ਤੁਹ ਹੋ ਗਿਆ ਮੂਤ ਹੋ ਆ ਹੁਣ ਯੁੱਧ ਨੀਤੀ ਗਲਤ ਨਹੀਂ ਹੋ ਸਕਦੀ ਜੇ ਪੱਕਾ ਹੋ ਗਿਆ ਝੜਕਦੀ ਨਹੀਂ ਸਕਦੇ ਜਿਹੜੇ ਯੁੱਧ ਨੀਤੀਆਂ ਰਾਜਨੀਤੀ ਵਰਤੀ ਹੈ ਉਹਨੇ ਬਾੜੀ ਖੇਰ ਵੀ ਪੂਰਾ ਯੁਧਨੀਤੀ ਅਬ ਰਾਜਨੀਤੀ ਧਰੁਨੀਤੀ ਤੇ ਦੇ ਰੇਸ਼ੇ ਪਾ ਸਕਦੇ ਐਵੇਂ ਨਹੀਂ ਗੁਰੂ ਬਦੇ ਫਾਲਤੂ ਵਰਤੀਆਂ ਮਾਟ ਗੋਦਾਵੋਂ ਨਾਲ ਦੋ ਦਿੱਤੀਆਂ ਹੋਰ ਵਰਤ ਕੇ ਦੱਗੇ ਪਰਲੀ ਵਾਰ ਆਰਾਮ ਤੇ ਤੂੰ ਕਹਿ ਦੇਣਾ ਵਰਤੀ ਹੋਣੀ ਮਰਦੋ ਜੀ ਲੋਕ ਕੀ ਨਿਰਵਾਣ ਨਾ ਕਰਦੇ ਕਹਿੰਦੇ ਕਿ ਇਸ ਨੂੰ ਕਹਿ ਦੇਣਾ ਵਰਤਿਆ ਨਹੀਂ ਵਰਤੋ ਜੀ ਹੈ ਮੇਰੇ ਦਾ ਪਤਾ ਲੋਕ ਦਾ ਪਤਾ ਬੜੀ ਨਿਰਤ ਤੁਸੀਂ ਸਾਬਤ ਕਰੋ ਫਿਰ ਤੋਂ ਉਹਦਾ ਉਹ ਨੀਤੀ ਇੱਕ ਬੰਦਾ ਸਾਬਤ ਕਰੋ ਅੱਜ ਤੱਕ ਫਿਰ ਵੇਪਾਰਸ਼ਾ ਦੇ ਬੁਲਾਵਾਂਗੇ ਜੀ ਨਿਵਾਦੀ ਤੇ ਦੇ ਦੀਆਂ ਕੱਟੀਆਂ ਨੇ ਧਰਮ ਨੀਤੀ ਇਹੋ ਉਤਰਾ ਪੈਲ ਨੂੰ ਯੋਧ ਨੀਤੀ ਦੂਆ ਰੂਪ ਰਜਨੀਤੀ ਤੀ ਕਰਦੀ ਯੋਧ ਨੀ ਤਾਕੂ ਨੀਤੀ ਤਾਂ ਹੈ ਉਹ ਯੋਧ ਨੀਤੀ ਵੀ ਆ ਵੀਰ ਸੁਣਾ ਕਰਾਤੀ ਇਹਨਾਂ ਨੂੰ ਬਿਲਕੁਲ ਕਾਇਰ ਨਹੀਂ ਕੀਤਾ ਇਹ ਗੱਲ ਕਰਾ ਫੇਰ ਬਾਝੋਂ ਕਾਇਰ ਨਹੀਂ ਇਹ ਸਬੂਤ ਦਿੱਤਾ ਸੀ ਆਸ਼ਵਾਸਨ ਦਿੱਤਾ ਸੀ ਵੀ ਨੂੰ ਜਿਹੜੀ ਵੀ ਗੱਲ ਕਹਿੰਦਾ ਉਹਨੇ ਸੱਚ ਹੈ ਇੱਕ ਪਾਸੇ ਵੀ ਹੈ ਇੱਕ ਪਾਸੇ ਸਾਰਾ ਸਟਾਫ ਹੈ ਜਿੱਦੂਰ ਬੁਸਰਬਤ ਕਿ ਉਹ ਅਸਰੇ ਖਿਲਾਫ ਇੱਕ ਵਾਰ ਇਕੱਲਾ ਪਿਆ ਵੀ ਯਾ ਵੀ ਇਹਨੇ ਕਹੇ ਵੀ ਗੁਰੂਕਰ ਤੁਹਾਡਾ ਹਕਾਇਕੀ ਹੈ ਹਿੰਦੁਸਤਾਨ ਨੂੰ ਇਸਲਾਮ ਦਾ ਰੂਹ ਜਵਾਨਾਂ ਚ ਅੱਦਾ ਸਮਝਦਾ ਇਸਲਾਮ ਦਾ ਰਾਜ ਹੋਵੇ ਇਹ ਉਹੀ ਨੀਤੀ ਹੈ ਉਸ ਵੇਲੇ ਵਾਲੀ ਜਿਹੜਾ ਬਿਲਕੁਲ ਬਦਲਾ ਨਹੀਂ ਆਇਆ ਨਾ ਦਰਬਾਰ ਬਿਲਕੁਲ ਉਹ ਦਰਬਾਰ ਉਹ ਕਹਿੰਦੇ ਫੌਜਾਂ ਤਾਂ ਬਣਾਉਂਦੇ ਨੇ ਰਾਜਪੁਰ ਉਹ ਕਹਿੰਦਾ ਰਾਜ ਕਿੱਥੇ ਹੋਣਾ ਜਿਹਨੂੰ ਰਾਜਦਾਨਾ ਤਾਂ ਸਾਰੇ ਖਿਲਾਫ ਰਹੇ ਤੇ ਰਾਜ ਕਿਰੂ ਦੋਲੇ ਜੂ ਦਾ ਖਿਲਾਫ ਰਹੇ ਸਾਰੇ ਹਾਂ ਦਵਾਣਾ ਕਿਉਂ ਕੋਲ ਹੈ ਤੂੰ ਰਾਜ ਸਭ ਚਾਹਤੀਆਂ ਰਾਜਾ ਵੀ ਉਹ ਤਾਂ ਠੀਕ ਉਹ ਜੇ ਰਾਜਦਾਨਾ ਹੋਵੇ ਤਾਂ ਧਰਮ ਨੀਤੀ 'ਚ ਫਰਕ ਪਉਂਦਾ ਪਹਿਲਾਂ ਦੋ ਚ ਸਹਿਮਤ ਨੇ ਇਹ ਕਹਿੰਦੇ ਨੇ ਵੀ ਘੱਟ ਤੋਂ ਘੱਟ ਜਿਹੜਾ ਤੁਹਾਡਾ ਓਹਨ ਮੇਰਾ ਵੱਟੋ ਵੱਟ ਮਾਰੇ ਲੋ ਘੜ ਕੋ ਘੜ ਮਾਰਾ ਰਾਜ ਇਹ ਹੋ ਜਾਣਾ ਉਹਦੀ ਅਧਿਆਜ ਘਾੜੇ ਰੁਕਣਾ ਤੇ ਤੂੰ ਜੇ ਕਾਲ ਕਾਲ ਰੁਕਣਾ ਰੋਟ ਰੋੜਾ ਹੋ ਹੈ ਇਹ ਧਰ ਗੁਨੀਤੀ ਹੈ ਕੋਣਾ ਰਾਜਾ ਬਣਾਉਂਦਾ ਰਾਜਨੀਤੀ ਰਾਜਨੀਤੀ ਕੀ ਰਾਜਨੀਤੀ ਹੁ ਕੀ ਬਣਾਉਂਦੇ ਰਾਜਾ ਨਹੀਂ ਤਾਂ ਆਪਣਾ ਫਾਇਦਾ ਤੇ ਰਾਜਨੀਤੀ ਸੰਸਾਰੀ ਫਾਇਦਾ ਸੰਸਾਰੀ ਖੇਡ ਹੈ। ਤਰੁਣੀ ਦੀ ਨਿਰਗਾਰੀ ਖੇਡ ਹੈ। ਵੀ ਉਹਦੇ ਨੀਤੀ ਚ ਪਰਮੇਸ਼ਰ ਦੇ ਹੁਕਮ ਦਾ ਫੈਸਲਾ ਲੈਣ ਉਹ ਕੋ ਮਾਇਆ ਕਿ। ਵੀ ਫੈਸਲਾ ਤੇਰੇ ਆ। ਫਿਰ ਉਹ ਦੇਖ। ਵੀ ਇਹ ਤੁਹਾਨੂੰ ਮਜ਼ਬੂਤ ਕਰਨ ਵਾਸਤੇ ਹੈ ਇਹ ਝੂਠ ਬੋਲਦੇ। ਐਸਾ ਹੈ ਹੋਇਆ ਵਿਚਾਰਦਾ ਗਵਾਲੀਆਂ ਤੱਕ ਰੇ। ਉਹ ਜਿਹੜੇ ਸਾਰਾ ਏਰੀਆ ਤੱਕ ਰਾਜੇ ਨਾਲ ਗੁਰੂ ਬੰਦੇ ਸੀ ਗੁਰੂ ਘਰ ਨੂੰ ਬੰਦੇ ਸੀ ਉਹ ਬੜੇ ਗੱਲਾਂ ਕਰਦੇ ਸੀ ਵੀ ਹਾਂ ਬਈ ਬਗਾਵਤ ਹੋ ਰਹੀ ਹੈ ਪੰਜਾਬ ਚ ਕਿ ਅਗੁੱਟੂ ਵੀ ਆਪਾਂ ਨਾਲ ਰਹਾਂਗੇ ਇਥੇ ਬੋੜ ਆਪਾਂ ਵੀ ਲੜਦੇ ਹੁਬੀ ਲੜਦਾ ਇਥੋਂ ਅਗੁੱਟੂ ਇੱਥੇ ਲੀਗ ਦੇ ਖਰਾਬ ਹੋ ਜਾਏਗਾ ਉਹ ਇਹ ਗੱਲਾਂ ਕਰਦੇ ਵੀ ਉੱਥੇ ਨੂੰ ਭੇਜ ਦਿੰਦੇ ਆ ਜੇ ਤਾਉਤੇ ਉਹਨਾਂ ਨਾਲ ਰੱਖੇਰੇ ਸਲਾਮ ਵਾਲੇ ਉਹ ਨੂੰ ਦੇਖਾਓ ਤੂੰ ਉਹ ਦੇਖਾਓ ਉਹਦੇ ਸੀ ਆਈ ਡੀ ਛੱਡ ਦੇ ਉਹਨਾਂ ਕੋਲੇ ਭੇਜ ਦੇ ਨਾਲ ਉਹ ਕਰਦੇ ਨਹੀਂ ਤਾਂ ਕੁਝ ਇਹਨਾਂ ਦਾ ਕੋਈ ਸੀ ਆਈ ਡੀ ਉੱਥੇ ਗਿਆ ਹੋਵੇ ਨਹੀਂ ਗਿਆ ਉੱਥੇ ਛੱਡ ਦੇ ਉੱਥੇ ਪਲਾਨ ਬਣਾ ਲੈਣ ਇਕੱਠੇ ਉੱਥੇ ਇਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਸਮਝਾ ਸਗੋ ਬੋਧਰ ਨੂੰ ਜੋੜੋ ਸੋਕੀ ਤੁਮ ਮਤਲਬ ਤਾਂ ਕਿ ਕੇ ਤੁਹਾਨੂੰ ਕੋਈ ਤਕਲੀਫ ਹੋਵੇ ਕਹ ਲਓ ਤੁਸੀਂ ਮੇਰੇ ਨਾਲ ਬਹਿ ਜਾਓ ਪਰ ਤੁਸੀਂ ਆਪਣੇ ਆਪ ਹੀ ਬੋਲਦਾਰੀ ਨਾਲ ਰਾਜਾ ਵੀ ਮਾ ਜੇ ਕੋਈ ਗਲਵਾਤ ਹੈ ਵਿਚਾਰਲੇ ਕੋ ਖਰਾਬ ਕਰਦੇ ਨੇ ਚਾਰਲੇ ਕਰ ਦਿੱਤਨਾ ਵਿਚਾਰਿਆਂ ਦੀ ਗਲਤੀ ਹਲਕਾਰਾਂ ਦੀ ਹੁੰਦੀ ਹੈ ਇਹ ਗਲਤੀ ਤਾਂ ਕਿਸੇ ਦੀ ਹੁੰਦੀ ਹੈ ਟ੍ਰੇਲਾ ਲੋਕ ਦੇ ਦਰਜਾ ਕੋ ਸਰਕਾਰ ਨੂੰ ਕਤਵੈ ਨਹੀਂ ਕੱਲ ਤਾਂ ਸਰਸਿਆਲੇ ਦੀ ਆਹ ਸਰਕਾਰ ਦੀ ਇਹ ਜਦੋਂ ਕਾ ਉਹ ਕਰ ਲੋ ਆਖਰ ਹਰ ਗੱਲ ਦਾ ਦੋਸਰੇ ਨਾਲ ਗੱਲਬਾਤ ਹੁੰਦੀ ਹੈ ਮਸਲਾ ਹੁੰਦਾ ਤੁਸੀਂ ਮਨੂ ਵਿੱਚ ਪਾ ਲੇ ਜੇ ਤੋ ਸਿੱਧੀ ਨਾਲ ਮੈਨੂੰ ਬੋਲ ਸੁਲਾ ਹੋਗੀ ਜੇ ਬਵੱਜਾ ਉਹ ਤੇ ਬਾਹਰ ਖੜ੍ਹ ਦੋ ਤੇ ਰਾਜੇ ਕੋਲੋਂ ਵਿਸ਼ਵਾਸ ਹੋ ਗਿਆ ਤੇ ਸਾਹ ਤੁਮਨੇ ਕਰਤਾ ਵੀਆ ਸੱਚਾ ਹੋ ਗਿਆ ਝੂਠੇ ਫਿਰ ਗੱਲ ਇਹ ਹੋਈ ਵੀ ਤੁਸੀਂ ਇਹ ਗੱਲ ਹੋਈ ਰਾਜਾ ਅਧਿਰਾਣ राजे ਕੋਸ਼ਿਸ਼ ਗੜਬੜੀ ਕਰਨਗੇ ਖੁਕੂਬੇ ਦੇ ਖਿਲਾਫ ਕੋਈ ਐਸੀ ਸਾਜਿਸ਼ ਨਹੀਂ ਕਰਨਗੇ ਜੇ ਸਰਕਾਰ ਨੂੰ ਪਤਾ ਲੱਗੇ ਤਾਂ ਉਹ ਦੀ ਪੋਰਡ ਛਾਲ ਕਰ ਲਿਓ ਐਕਸ਼ਨ ਕਰ ਲਓ ਕਿਸੇ ਦੇ ਕੋਲ ਉਹਦੀ ਇਨਕੁਆਰੀ ਕਰਾ ਲਿਓ ਕੀ ਉਹ ਬੰਦਾ ਝੂਠਾ ਨਹੀਂ ਉਹ ਆਮ ਐਕਸ਼ਨ ਹੁੰਦਾ ਐਕਸ਼ਨ ਕਰੇ ਸਾਰੇ ਸਾਰੇ ਵੀ ਫੌਜ वो ਜਿਹੜੇ ਵੀ ਇਸ਼ਾਰਤ ਕਰਨ ਹੋਣੇ ਵਾਲੇ ਤੇ ਕਰਨ ਵਾਲੇ ਸੀ ਉਹਨੂੰ ਵਲਟ ਹੋ ਗਿਆ ਵੀ ਜੇਲ੍ਹ ਕਾਰੀ ਨੂੰ ਲੱਗੀ ਬੜੀ ਠੂਠੀਆਂ ਹਵਾ ਵਾਲੇ ਤੇ ਚੁੱਪ ਕਰ ਗਿੱਟ ਉਹਦੇ ਤਹਿਤ ਇਹ ਦਸ ਇੱਥੇ ਗੁਰੂ ਕਰਨਾ ਹੁੰਦਾ ਕਿ ਜੇ ਕੋਈ ਗੜਮਲ ਹੈ ਕਰਦਾ ਸਾਡੇ ਨਾਲ ਉਹ ਨਾਲੇ ਏਰੀਆ ਚੋਂ ਭੱਜਦੇ ਜਿਹਨਾਂ ਰੋਲਾ ਲਾਹੌਰ ਵਾਲੇ ਸੂਬੇ ਨਾਲ ਜਲੰਧਰ ਵਾਲੇ ਸੂਬੇ ਨੂੰ ਰੋਲਾ ਸੀ ਉਸਲਵੰਡਾ ਦਾ ਏਰੀਆ ਛੱਡ ਜਾਂਦੇ ਉਹਨਾਂ ਦੇ ਏਰੀਆ 'ਚ ਨੇ ਹਟਣਾ ਏਰੀਆ ਇਹਨਾਂ ਨੂੰ ਲੋੜ ਸੀ ਜਗ੍ਹਾ ਜਿੱਥੇ ਬਗਦਰ ਦੇ ਸੈਟਲ ਹੋ ਗਏ ਇੱਥੇ ਆ ਕੇ ਫਿਕਸ ਹੋ ਗਏ ਥਾ ਇਹ ਰਾਜਨੀਤੀ ਵਧੀਆ ਸੀ ਕੇ ਜਿਹੜੀ ਖੇਡੀ ਉੱਥੇ ਇਹ ਰਾਜਨੀਤੀ ਸੀ ਜਿਹੜੀ ਰਾਜਨੀਤੀ ਐ ਸੀ ਜਦੋਂ ਉਹ ਕਰਤੇ ਉਸ ਚੰਦੂ ਲੈ ਲਿਆ ਚੰਦੂ ਕਹਿੰਦਾ ਦੀ ਸੀ ਕਰ ਕਰਤਾ ਵੀ ਤੁਹਾਡੇ ਨਾਲ ਤੱਕੋ ਇਹ ਗੱਲ ਨਹੀਂ ਜਿਨ੍ਹਾਂ ਨਾਲ ਤੱਕੋ ਪੰਜਵੇਂ ਬਾਦਸ਼ਾਹ ਦਾ ਜੋ ਸ਼ਰਾਰਤ ਕੀਤੀ ਹੋ ਰਹੀ ਹੈ ਜੋ ਗੱਲ ਕਹਿ ਰਿਆ ਸੀ ਉਹ ਅਸੀਂ ਵੀ ਅਗਿਰ ਕਿਉਂ ਉਹਨੋ ਤਾਂ ਲਾਇਕੇ ਕਿਹਾ ਹੈ ਜੇ ਤੇਰੇ ਬੰਦੇ ਖਸੂਰ ਸਾਡੀ ਗਲਤੀ ਹੈ ਸਾਡੇ ਬੰਦੇ ਦੀ ਗਲਤੀ ਅਸੀਂ ਭਾਰੀ ਦੀ ਕਰਾਈ ਕੋਈ ਦੀ ਗਲਤੀ ਹੈ ਸਾਡੀ ਲਾਪਰਵਾਹੀ ਹੈ ਉਹ ਲਾਪਰਵਾਹੀ ਕਰਕੇ ਉਹਦੀ ਉਹ ਬਦਲਦੀ ਤੁਸੀਂ ਆਪਣੀ ਸਿਚੁਏਸ਼ਨ ਬਦਲੋ ਤੇ ਜਗ੍ਹਾ ਹੀ ਛਡੋ ਉਹਨਾਂ ਏਰੀਆ ਤੋਂ ਬਾਹਰ ਜਾਈ ਜਾਓ ਫੇਰ ਕੋਈ ਦੁਆ ਨਹੀਂ ਸਰਦਾ ਦੁਆ ਦੇ ਰਾਈ ਬਾਈ ਤਾਂ ਇਹ ਸਾਰੇ ਹਿੰਦੂਏ ਨੇ ਕੋਈ ਰੌਲਾ ਹੀ ਨਹੀਂ ਉਹ ਤੇ ਜੁਨੀ ਰਾਜਗੁਰੂ ਜੀ ਉੱਥੇ ਵੀ ਕੋਈ gadgad ਹੁੰਦੀ ਆ ਫਿਰ ਅਸੀਂ ਆਪੇ ਹੈਗੇ ਹਾਂ ਫੇਰ ਉਹ ਸਾਰਾ ਜਿਹੜਾ ਸੀ ਚਦੂ ਦੇ ਫਿਰ ਅਸੀਂ ਆਪੇ ਬਦਲ ਲੈਣੇ ਦੇ ਰਾਜ ਸੀ ਜਿਹੜਾ ਰਾਜ ਦੀ ਦਿੱਤੀ ਹੈ ਜੰਦੂ ਲਿਆ ਤੁਸੀਂ ਦੱਸੋ ਯੁੱਧ ਦੀ ਦਿੱਤੀ ਧਰਮ ਦੀ ਦਿੱਤੀ ਰਾਜ ਦੀ ਦਿੱਤੀ ਤਾਂ ਇਹ ਪੂਰੇ ਹੋਏ ਕਿ ਰਾਜ ਦੀ ਦਿੱਤੀ ਚੰਦੂ ਉੱਥੇ ਸਾਰੀ ਗੱਲ ਕਲਾ ਦਿਖਾਤੀ ਬਲ ਦਿਖਾਤਾ ਜੀ ਬਸ ਔਰ ਉਹ ਦਖਾਤਾ ਸਭਾਈ ਜਿਹੜੀ ਸ਼ੱਕ ਕੀਤੀ ਜਾਂਦੀ ਸੀ ਉਹ ਸਾਡੇ ਅੰਦਰ ਬਿਲਕੁਲ ਮੈਲ ਨਹੀਂ ਮੈਲੇ ਦੇ ਉੱਤੇ ਫਿਰ ਉਹਨੇ ਕਹੇ ਗੁਰੂ ਘਰ ਹੀ ਲੜੂਗਾ ਛੇਵੇਂ ਪਾਤਸ਼ਾਹ ਦੇ ਆਪਾਂ ਹੀ ਲੜਨਾ ਜੇ ਲੜਨ ਵੀ ਆਪਾਂ ਨੇ ਲੜਨਾ ਲੜਾਈ ਤੇ ਬਾਅਦ ਪਤਾ ਨਹੀਂ ਲੱਗਦਾ ਹੁੰਦਾ ਕਿਹਦਾ ਪਹਿਲ ਪਹਿਲ ਕਿਹਦੀ ਹੋਵੇ ਕਿਵੇਂ ਹੋਈ ਗੱਲ ਬਾਅਦ ਉਹ ਝੂਠ ਬੋਲੀ ਜਾਂਦਾ ਉਹ ਝੂਠ ਬੋਲੀ ਜਾਂਦਾ ਤੁਸੀਂ ਕੁਝ ਕਹਿਣਾ ਹੀ کہانی نسب پاجا نے لڑائی پھر کی بعد جو وہ تھا جھاگ کی تھی جو بھی بھائی داریاں لگی تھی دوسرا مالا نہیں تھی بھائی داریاں تھی وہ تو کیسے ہور ہو گیا نا بس جا کے کیسے ہور ہوے ਇਹ ਆ ਵੀ ਇਸ ਨੂੰ ਬੁਖਤਣਾ ਜੇ ਫੇ ਦੁਬਾਰਾ ਤੜਾ ਤੜਾ ਗੋੜਿਆ ਉਹ ਵੀਗੇ ਰਾਜ ਕੈਂਪ ਕਰਦੇ ਜੰਦੇ ਦੇ ਤੇਾਰੇ ਬਣਾ ਲੈ ਨਿਸ਼ਾਨ ਬਣਾ ਲੈ ਉਹ ਬਣਾ ਲਿਆ ਜਦੋਂ ਟਾਈਮ ਬਦਲ ਗਿਆ ਉਹ ਰਾਜਾ ਨਾ ਨੇ ਰੰਗੇ ਵਾ ਗਿਆ ਫਿਰ ਉਹ ਤੇ ਜੋਟਾ ਲੈ ਬਣਾ ਫਿਰ ਉਹੀ ਗੱਲ ਸ਼ੁਰੂ ਕਰ ਲਈ ਸਮਝੇ ਪੁਰਾਣੇ ਹਾਨਕ ਲਿਖਿਆ ਵੀ ਰਾਜਨ ਚਾਹ ਹੁਬੂਤ ਤੇ ਜਾਉ ਕੇ ਹਰ ਵੀ ਕਾਸ਼ਨ ਕੀਤਾ ਇਹ ਗੱਲ ਤੇ ਇਹ ਗੱਲ ਆ ਮੇਰੇ ਦੁਆਰਾ ਫੇਜ ਉਹਰੋਂ ਦੇ ਠੱਕੇ ਉਹ ਗਿਆ ਬਣ ਸ਼ਕ ਲੈਂਦੇ ਉਹਰੋਂ ਦੀ ਚਾਲ ਸੀ ਸੀ ਆਈ ਡੀ ਉੱਤੇ ਬੁਲਾਈ ਸੀ ਉਹ ਤੱਕਾਇਆ ਤੱਕਿਆ ਸੀ ਕਿ ਜੇ ਉਹ ਬਾਬਾਗੇ ਇਸ ਗੱਲ ਨੂੰ ਇਸ ਤਰੀਕੇ ਨਾਲ ਲੈ ਵੀ ਸਾਨੂੰ ਕਹਿੰਦਾ ਉਹਨੂੰ ਸ਼ਕਲ ਉਹਨੂੰ ਦਰਵਾਜ਼ੇ ਤੇ ਹੀ ਦੱਟੋਰੀ ਕੋਈ ਕੋਣੋਂ ਕਹਿੰਦੀ ਹੈ ਪਰ ਬੋਰਡ ਕਰਾ ਕੇ ਬੋਰਡ ਕਰਾਣਾ ਤਾਂ ਦੂਏ ਸੀ ਨਾ ਇੱਥੋਂ ਵੱਲ ਗਿਰੋਣਾ ਕੀ ਸ਼ੱਕ ਪੈ ਗਿਆ ਰੋ ਦੁਬਾਰਾ ਸਾਲ ਲੰਘੇ ਜਾਂਦੇ ਬਾਅਦ ਸਿਰਫ ਆਸ਼ਾ ਦਾ ਕੋ ਹਾਂ ਪਰ ਇਹ ਇਤਿਹਾਸ ਅਧੂਆ ਇਤਿਹਾਸ ਹੈ ਕਿੰਨਾ ਫਰਕ ਹੈ ਦੇਖੋ ਲੱਗਦਾ ਨਹੀਂ ਕੁਝ ਪਰ ਤੱਥ ਦੇਖੋ ਵੀ ਤਕੀਦ ਹੈ ਸਾਡੇ ਕੋਲ ਪਈ ਤੱਥ ਦੇ ਆ ਤੇ ਹਾਸਿਆ ਤੇ ਤੱਥ ਦੇ ਦਾ ਤੇ ਫੈਸਲਾ ਲੈ ਲਿਆ ਅਦਾਲਤ جے نہیں او ਕੁੜੀ ਤੁਸੀਂ ਤੁਹਾਰੀ ਤੁਹਾਡੇ ਬੋਏ ਕਿੱਥੇ ਨੇ ਬੋਏ ਲੈ ਅਰੁਸੀ ਦਾ ਰਸਾ ਟਲੇ ਅਰੁਸੀ ਦਾ ਬੋਏ ਕਿੱਥੇ ਗਿਆ ਤੇਰਾ ਬੋਏ ਕਿੱਥੇ ਗਿਆ ਕਿਉਂ ਨਹੀਂ ਦੱਤੀ ਬੋਏ ਚੰਗਾ ਭਾਈ ਹੋ ਅਗਲਾ ਕੀ ਕਹਿੰਦਾ ਗਵਾ ਕੀ ਕਹਿੰਦੇ ਹੈ ਜੇ ਤੁਸੀਂ ਨਹੀਂ ਹੈਗੇ ਕਿਉਂ ਚਲੇਗੇ ਬੋਏ ਜਿਹੜੇ ਚੱਲਦੇ ਰਹੇ ਨੇ ਕਤਲ ਤਪ ਕਤਲ ਤੇ ਬਾਤ ਤੱਕ ਵੀ ਚੱਲਦੇ ਰਹੇ ਤੇ ਹੁਣ ਕਿਉਂ ਨਹੀਂ ਹੈ ਕਿਉਂਕਿ ਤੁਸੀਂ ਦੇ ਦਿੱਤੀ ਹੈ ਇਹ ਰੱਖ ਤੱਕ ਤੁਸੀਂ ਕਿਹਾ ਦੇ ਵਿੱਚ ਕੋਈ ਘਟਵੜਾ ਆਪਣੀ ਜਗਾ ਕਹਾਣੀ ਬਿਆਨ ਕਰ ਤੁਸੀਂ ਹੂੰ ਤੱਤ ਕਹਾਣੀ ਬਿਆਨ ਕਰਨਾ ਹੈ ਅਦਾਲਤਾਂ ਇਹਨਾਂ ਤੱਥਕ ਦੇ ਆਧਾਰ ਤੇ ਜਦ ਕੋ ਲਿ ਦਿਓ ਐਵੇਂ ਤੇ ਨਹੀਂ ਫੜੇ ਉਹ ਹਾਂਜੀ ਹਾਂਜੀ ਬੋਲ ਤੱਕ ਤੱਕ ਪਹੁੰਚਣ ਵਾਸਤੇ ਬੁੱਧੀ ਦੀ ਲੋੜ ਹੈ ਸਖਤ ਬੁੱਧੀ ਦੀ ਲੋੜ ਜੀ ਹੈ ਹੁਣ ਉਹ ਫੇਰ ਤੋਂ ਕੋਈ ਅਗਵਾ ਨਹੀਂ ਬਹੁਤ ਦੇਰ ਬਹੁਤ ਦੇਰ ਲੱਗਣਾ ਨਾ ਜਿਹਨਾਂ ਖਾਤਰ ਪਤਾ ਕੀ ਸੀ ਜਿਹਨਾਂ ਖਾਤਰ ਅਸੀਂ ਤੋਏ ਗੱਲ ਅਗਲ ਕਾਹਨੂੰ ਕੋਤੀ ਨਹੀਂ ਸਾਡੇ ਰੜਿਆ ਵੇ ਕਹਾਂ ਗੱਤਰੇ ਬਿਦੂਰਾ ਕਿ ਅਕਲ ਕੌਣ ਕੁੱਤੀ ਜਿਹੜੀ ਸਾਡੇ ਨੇੜੇ ਆ ਜਵੇ ਜਿਹਨਾਂ ਦੇ ਗੁਰੂ ਇਹ ਜੇ ਤੇ ਧਰਮ ਨੀਤੀ ਯੁੱਧ ਨੀਤੀ ਔਰ ਰਾਜਨੀਤੀ ਦੇ ਬੋਲਤੇ ਉਹ ਗੱਲਾਂ ਬੜਵੜੀਆਂ ਆਦਾਂ ਨੇ ਬਲੇ ਆ ਜੋ ਧਰਮ ਨੀਤੀ ਯੁੱਧ ਨੀਤੀ ਰਾਜਨੀਤੀ ਆਕਾਲੀ ਪੰਡਤਾਂ ਤੋਂ ਬੜੇ ਖਦਮ ਗੁਜ਼ਰੀ। ਪੰਡਤਾਂ ਤੋਂ ਬਦਲ ਤੀਪੀਸੀ ਰਾਜਨੀਤੀ ਅਰ ਯੁੱਧ ਨੀਤੀ ਦੋਹੇਲੀ ਸੀ। ਯੁੱਧ ਨੀਤੀ ਵੀ ਸੀ ਕੋਈ ਬਾਰਾਂਖਾ ਨਹੀਂ ਰਹਿ। ਪਰ ਯੁੱਧ ਨੀਤੀ ਬਾਰਾਂਖਾ ਨਹੀਂ ਰਹਿਦੀ ਸਿੱਧੇ ਬਹਿ ਲਾ ਦਿੱਸ। 2 ਸਾਲ ਜਿਆਦਾ ਹੋ ਜਾਂਦਾ ਸੀ। ਇਹ ਵੀ ਯੁੱਧ ਨੀਤੀ ਮਾਰ ਸੀ। 2 ਜਿਆਦਾ ਹੋ ਜਾਂਦਾ ਸੀ। ਕਾਲੀ ਭੂਲ ਅਧੋਤੀ ਆਪਣੀ ਸੀਧੀ ਦਾ ਕਾਰਨ ਨਹੀਂ ਹੁੰਦੀ ਤੀਤੀ ਸੀ ਹੁੰਦੀ ਤਾਂ ਸੀ ਧਾਰ ਸੀ ਧਾਰ ਸੀ ਜੀ ਲੋਕ ਕਿਲਾ ਕੇ ਕਾਲਾ ਪੈਣਾ ਇਹ ਦੀ ਘਾਟ ਮਨ ਕਾਲਾ ਪੈ ਗਿਆ ਉਸ ਬਾਹਰ ਬਲਕਿ ਕੋ ਜਾਣੀ ਸੀ ਕਾਲਾ ਬਹਿ ਗਿਆ ਬਾ ਮੈਂ ਮਾਰਦਾ ਮਾਰਦਾ ਦਿੱਲੀ ਚਲੇ ਗਿਆ ਟੱਕਰੇ ਘਰ ਜਾ ਕੇ ਘਰ ਦੇ ਦੇੜੀਆਂ ਅਗਲੇ ਨੇ ਆਪਣੀ ਦੇੜੀਆਂ ਦੇ ਅੰਦਰ ਹੀ ਘੇ ਲਿਆ ਅਬਲੀ ਰੱਤੀ ਕਾਲਾ ਵਗਣ ਜੇਦਰੀ ਤੇ ਜੇ ਜਾਣਦਾ ਹੁੰਦਾ ਬਾ ਕਿਉਂ ਹੰਦ ਢੋਟਗਾ ਕੇ ਕਿੱਤੇ ਗੱਲਾਂ ਨਹੀਂ ਘੜ ਸੀ ਜੋ ਨਹੀਂ ਕਿਤੇ ਆਪਣੇ 1000 ਕੋ ਕਿਤੇ ਦੇ ਦੇ ਕਿ ਇਹਦੀ ਕੈਲਕੂਲੇਸ਼ਨ ਤੁਹਾਡੇ ਕੋਲ ਹੈ ਕਿ ਉਹਦੀ ਕੀ ਕਿ ਬੇ ਇਹਦੀ ਦੀ ਕਿੱਥੇ ਮੇਰੇ ਕੋ ਗਿਆਨ ਕਿੰਨਾ ਅਗਲਾ ਕੋ ਕਿਤੇ ਤੁਹਾਡੇ ਕੋਲ ਪੀਟਰ ਹੈਗਾ ਚਰਚਾ ਦੀ ਮਾਰਾ ਰਾਜਨੀਤੀ ਵੀ ਨਹੀਂ ਇਦਾਂ ਹੁੰਦੀ ਰਾਜਨੀਤੀ ਵੀ ਨਹੀਂ ਤਾਂ ਕਲਾਸ ਲਾਇਆ ਕਰੋ ਉਹ ਨੂੰ ਕ ਬਾਵੇਰੂ ਤੂੰ ਲੈ ਆ ਕੇ ਕਲਾਸ ਆਂਦੀ ਪਸੰਦੀ ਗੱਲ ਤਾਂ ਯਾਦ ਰਹੇ ਜਾਂਦੀ ਮੰਨਦੇ ਕਰ ਰਹੇ ਹੋ ਫਿਰ ਵਾਲੇ ਹੋਈ ਨੇ